ਜਿਹੜਾ ਕੋਖੜ ਦੇ ਬਲਕੇ ਅਸੀਂ ਪੜਦੇ ਹਾਂ ਕੋਖਦੇ ਨਹੀਂ ਕੋਖਦਾ ਹੁੰਦਾ ਵਚਣੋਂ ਤੋਂ ਵੀ ਗਲਤੀ ਕਿੱਥੇ ਕੀਤੀ ਹੈ ਸ਼ਾਸਤਰਾਂ ਦੇ ਕਿੱਥੋਂ ਦੇ ਸ਼ਾਇਰ ਹੋਏ ਨੇ ਇੱਕ ਤਾਂ ਦਾ ਵਚਣਾ ਇੱਕ ਹੁੰਦਾ ਪੜਨਾ ਇੱਕ ਤਾਂ ਠੀਕਾ ਪੜਿਆ ਇਹਨਾਂ ਦੇ ਸਾਹਬ ਸੋਦਾ ਅਸੀਂ ਉਹਨੂੰ ਵਾਚਦੇ ਆ ਵੀ ਗਲਤੀਆਂ ਕਿੱਥੋਂ ਕੀਤੀਆਂ ਸਾਹਬ ਸੋਦੇ ਪਰ ਉਹਨਾਂ ਦਾ ਸਾਡਾ ਕੀ ਬੇਨੂੰ ਕਿਵੇਂ ਜੋ ਖੋਜੇ ਸੋ ਭਾਵੇ ਉਹ ਕਿੱਥੇ ਅਸੀਂ ਉਹਦੇ ਗਲਤੀਆਂ ਦੇ ਗਲਤੀਆਂ ਕਿਉਂ ਕਰ ਗਿਆ ਇਹ ਕੀ ਗੱਲ ਹੋਈ ਕੀ ਕਾਰਨ ਹੋਇਆ ਮੈਨੂੰ ਵੀ ਉਹ ਲੱਗ ਪੰਡਤ ਨੇ ਜੋ ਕੋਈ ਜਾਣ ਕੇ ਕੀਤਾ ਸੀ ਇਹਦੇ ਘਰੇ ਨਹੀਂ ਕੀਤੀ ਸਰਵੇ ਅਸੀਂ ਵੀ ਮੇਰੇ ਨਾਲ ਉਹਦਾ ਹੋ ਜਾਵੇ ਸਹੀ ਗੱਲ ਸੀ ਅੱਜ ਵੀ ਇਹੀ ਹੋੜ ਅੱਜ ਵੀ ਇਹੀ ਹੋੜ ਤਾਂ ਕੁਝ ਨਹੀਂ ਗਲਤੀ ਨਾ ਹੋ ਜਵੇ ਇਹਦਾ ਨਹੀਂ ਹੈ ਮੇਰੇ ਲੋੜਾ ਦੀ ਗੋੜੀ ਬਾਡੀ ਕੋਟੀ ਵਿਆਹ ਕਰਨ ਦਾ ਬਦਲ ਲੱਗਿਆ ਸੀ ਉਹਨੂੰ ਜਦ ਤੂੰ ਵਿਆਹ ਕਰਨ ਤੇ ਚੱਲ ਕੇ ਟੀਕਾ ਕਰੇ ਨਹੀਂ ਸਕਦਾ ਉਹ ਤੇ ਤੂੰ ਟੀਕਾ ਛੱਡ ਦੇਗਾ ਨਕਰਤਾ ਤਾਂ ਉਤਰੇ ਹੀ ਨਹੀਂ ਘਰ ਆਵੇਂ ਉਤਰੇ ਤੇ ਵਿਆਹ ਕਰਨ ਦਾ ਆਧਾਰ ਬਣ ਕੇ ਤੂੰ ਚੱਲਦੇ ਦਵਾ ਟੀਕਾ ਕਰਨ ਲੱਗੇ ਵਿਆਹ ਤੇ ਘਰ ਉਤਰਦਾ ਨਹੀਂ ਤੂੰ ਕਸੂ ਕਰ ਲੈ ਟੀਕਾ ਸਕੋਂਗ ਗੱਲ ਯਾਰਾ ਉੜ ਗਈ <td>ਦੜੇ ਦੋ ਹੋ ਗਏ <td>ਦੜੇ ਦੋ ਹੋ ਗਏ ਜੇ <td>ਦੜੇ ਦੋ ਹੋ ਜਾਂਦੇ ਨੇ ਫਿਰ ਵਿਚਾਰ ਖਤਮ ਹੋ ਜਾਂਦੇ ਕੋਈ <td>ਤੜਾ ਰਹਿੰਦਾ ਹੈ ਤਾਂ ਵਿਚਾਰ ਚੱਲਦੇ ਰਹਿੰਦੇ ਉੱਥੇ ਦੋ ਅਟੜਾ ਦੋ ਜਾ ਕੇ ਬਹਿਦੇਗੇ ਤਾਂ <td>ਤੜੇ ਬੰਦੀ ਹੋ ਗਈ ਗਾਂਂਦ <td>ਤੜਾ ਲਈ ਜੇ ਤੜਾ ਉਥੇ ਗਿਆਨ ਹੀ ਨਹੀਂ ਹੁੰਦਾ ਦੋਹਾਂ ਤਾਂ ਵਿਚਾਰ ਦਾ ਵਿਸ਼ਾ ਹੈ ਤੜੇ ਦਾ ਵਿਸ਼ਾ ਨਹੀਂ ਹੈ ਜੇ ਤੜਾ ਆਪਣਾ ਲੈ ਵੀਰਾਂ ਦੀ ਠੀਕ ਮੰਨਣੀ ਫੇੜਾ ਹੈ ਠੀਕ ਹੋਵੇ ਮੈਂ ਤਾਂ ਕੋਈ ਚੀਜ਼ ਨਹੀਂ ਜਾਂਦੀ ਵਧਦੀ ਆ ਉਹ ਤਾਂ ਕੋਕੇ ਸ਼ਾਸਤਰ ਸਭ ਆਨਨ ਕਥ ਕੋਈ ਹੋਰ ਕਿਸੇ ਚੀਜ਼ ਦਾ ਕਥਨ ਨਹੀਂ ਕਰ ਰਿਹਾ ਇਸ ਇੱਕदाई ਕਰ ਰਹੇ ਦੇ ਹਵੇਸ਼ਾ ਇੱਕ ਹੀ ਰਿਹਾ ਹੈ ਪੁਰਾਣੇ ਵਿੱਚ ਵੀ ਇੱਕ ਨੂੰ ਇਸ ਨੂੰ ਮੰਨੇ ਇਹੀ ਹੁੰਦਾ ਹੈ ਜੀਵ ਇੱਕ ਹੈ ਜਿਹੜਾ ਇਹੀ ਨੇ ਆ ਜਨਮ ਤੋਂ ਲੈ ਕੇ ਇਹ बार-बार ਜਨਮ ਲਈ ਜਾਂਦਾ ਹੈ बार-बार ਜਨਮ ਲਈ ਜਾਂਦਾ ਹੈ ਇਹੀ ਚੱਲਦਾ ਹੁੰਦਾ ਹੈ ਚਾਹੇ ਬ੍ਰਹਮਾ ਸੀ ਚਾਹੇ ਵਿਸ਼ਨੂ ਸੀ ਚਾਹੇ ਰਾਮ ਸੀ ਚਾਹੇ ਕੋਈ ਸੀ ਕ੍ਰਿਸ਼ਨ ਸੀ ਜੇ ਮੁਕਤੀ ਹੋਇਆ ਤਾਂ ਇਹ ਤੁਰਿਆ ਜਾਂਦਾ ਫਿਰ ਯਾਦਾਂ ਟਡ ਰਿਕੜ ਗਈ ਬਾਹਰ ਨਹੀਂ ਤਾਂ ਫੇਰ ਚਲਦੀ ਹੈ ਵਿੱਚ ਯਾਦਾ ਗੋੜੀ ਕੇ ਚੋ ਬਾਹਰ ਗਈ ਨਹੀਂ ਤਾਂ ਵੇ ਗੇੜੇ ਦੇ ਵਿੱਚ ਚਲਦੀ ਦੇ ਵਿੱਚ ਹੀ ਚਲਦੀ ਏ ਹਾਂ ਆਧੁ ਜੁਗਾਦੀ ਹੁਣ ਬਹੁਤ ਨਾਨਕ ਇੱਕ ਹੈ ਸੋਰੀ ਆ ਜੁਗਾਦੀ ਇੱਕ ਹੈ ਸੋਰੀ ਚ ਹੈ ਇੱਕ ਹੀ ਅਸੀਂ ਇਹਨੂੰ ਦੋ ਤੋਂ ਕਹਿ ਦਿੰਦੇ ਇਹ ਆਪਣਾ ਧਿਆਨ ਦੋ ਤੋਂ ਕਰਦਾ ਹੈ ਸਿਰਫ ਧਿਆਨ ਕਦੇ ਉਧਰ ਕਦੇ ਉਧਰ ਕਰ ਲੈਂਦਾ ਹੈ ਤੇ ਆਣੀ ਇਧਰ ਉਧਰ ਜਾਂਦਾ ਹੈ ਹੈ ਕਿ ਇਹ ਤੇ ਦੋ ਰਿਬ ਨੇ ਇੱਕ ਹੈ ਬਲੇ ਧਿਆਨ ਤਾਂ ਵੱਟ ਜਾਂਦਾ ਜ਼ਰੂਰ ਹੈ ਕਿ ਕੋ ਕਾ ਸਰੀਰ ਮਾਇਆ ਦਾ ਦੋ ਚੀਜ਼ਾਂ ਦੇ ਸੰਸਾਰ ਇਕ ਝੂਠੇ ਕਸਚ ਚਲੋ ਜੇ ਆਪਾਂ ਸਿਰਫ ਗੱਲ ਦੇ ਤੌਰ ਤੇ ਲਈਏ ਬਾਈ ਆ ਜੀ ਗੱਲ ਛੱਡੋ ਅੱਖਾਂ ਲੂੜੀ ਦੀ ਜਿਹੜਾ ਗੱਲ ਝੂਠੀ ਗੱਲ ਵੀ ਦਾ ਸੁਣਦਾ ਹੈ ਉਹ ਤੇ ਕਿਸੇ ਵਿਸ਼ਵਾਸ ਕਰ ਸਕਦਾ ਕਿ ਘਟ ਗਿਆ ਉਹ ਰਹਿ ਜਿਹੜਾ ਅਸੀਂ ਪਤਾ ਮਗਰ ਲੋਕ ਮਿਲਾਇਨ ਲੋਕਾਂ ਨੇ ਝੂਠ ਬੋਲ ਕੇ ਲਾਇਆ ਦੋ ਪ੍ਰਕਾਰ ਦਾ ਤਾਂ ਫਿਰ ਹੀ ਗੱਲ ਹੋ ਗਿਆ ਤੇ ਹੰਦੋ ਪਾਸੇ ਵਟ ਗਿਆ ਉਹ ਕਾਚਾ ਦਾ ਸੰਦੇ ਮੁਰਗਾਰ ਦੇ ਜਿੱਥੇ ਗਿਆ ਉਹਦੀ ਗੱਲ ਸੀ ਉੱਥੇ ਹਾਂ ਸਾਰੇ ਸੱਤੇ ਲੱਦਲੇ ਪੁਰਾਣ ਕਾਚੇ ਤਾਂ ਜ ਦੋਏ ਆ ਕੱਚਾ ਇਹ ਦੋਏ ਧੰਦ ਤੁਹਾਨੂੰ ਗਿਆਨ ਨੂੰ ਹੈ ਉਹ ਤਾਂ ਉਹਨੇ ਇਕੱਠਾ ਇਹ ਨਾਲ ਵਾਸਤੇ ਕੀਤਾ ਉਹ ਇਸ ਧਨਵਾਸਤੀ ਇਕੱਠਾ ਕੀਤਾ ਉਹਨੇ ਪੈਸੇ ਗਵਾੜੂ ਦਾ ਗਾ ਇਕੱਠਾ ਕੀਤਾ ਉਹ ਸੰਸਾਰੇ ਤੁਹਾਨੂੰ ਇਹਦਾ ਰਖਦਾ ਉਹਨੂੰ ਗਾਣੇ ਦੀ ਰੂਹ ਬੰਦ ਹੈ ਹੂੰ ਤਾਲੀ ਹੁੰਦਾ ਜਿਹੜਾ ਦਾਵਤ ਆਹ ਪੌੜੀ ਮਨੇ ਮੇ ਮਨੇ ਇਹ ਬਿਨ ਹਰ ਦੂਸਰ ਨਾ ਹੈ ਇਹ ਗੱਲ ਦ੍ਰਿੜ ਕਰ ਲੋ ਕਹਲਣਾ ਹੁੰਦਾ ਦ੍ਰਿੜ ਅਸਲ ਗੱਲ ਕੀ ਹੈ ਅਸਲੀਅਤ ਤੱਕ ਪਹੁੰਚ ਕੇ ਦ੍ਰਿੜ ਕਰਕੇ ਰੱਖਣਾ ਇਹ ਗੱਲ ਫੇ ਛੱਡਣਾ ਨਹੀਂ ਯਾਰ ਹਮ ਤਾਂ ਪੈਰਾ ਦੇਣਾ ਪੈਰਾ ਦੇਣਾ ਹੀ ਕਹਿੰਦਾ ਜੇ ਸੱਚ ਹੈ ਜਦ ਹੱਥ ਆ ਗਿਆ ਫਿਰ ਵੀ ਛੱਡ ਲਉਂਦੀ ਕੀ ਕਰਦੇ ਹਾਂ ਜੱਗਾ ਕਾਲੋ ਮਨੇ ਇਹ ਦਿਨ ਹਰ ਦਸ ਦੇ ਵਿੱਚ ਦਿੜ ਕਰ ਲੋ ਦਿਨ ਹਰ ਦੂਸਰ ਨਾ ਹੈ ਹੱਥ ਤੇ ਬਿਰੋ ਤੇ ਹੋਰ ਕੁਛ ਨਹੀਂ ਹੈ ਸੋਸਾਰ ਜੋਤ ਜਿਹੜੀ ਹੈ ਇੱਕੋ ਹੀ ਹੈ ਹਰੂ ਦਾ ਨੀਚ ਕਹਿੰਦੇ नहीं ਨਹੀਂ ਤਾਂ ਹਰਦਮਣ ਦੂਜਾ है, ਕੋਈ ਹੈ ਤਾਂ ਦੂਜਾ ਹੈ ਨੀਚ ਕਿੱਥੋਂ ਆਗੇ ਅਸਲ ਚ ਇਹ ਚੋਟ ਉਹਨਾਂ ਦੇ ਵਰਲਡ-ਵਰਲਡ ਤੇ ਹੋ ਰਹੀ ਹੈ ਇਹ ਗੱਲ ਕਿਉਂ ਕਹੀ ਹਰਵਰਡ ਦੂਸਰ ਦਾ ਉਹ ਵੀ ਬੰਦਾ ਹੈ ਹਰਵਰਡ ਦੂਸਰ ਦਾ ਹੈ ਜੇ ਦੂਸਰ ਨਹੀਂ ਡੇਟਾ ਤੇਤਾ ਆ ਕੇ ਨੀਚ ਕਰ। ਬਸ ਇੱਕ ਹੀ ਨਹੀਂ ਗੱਲ ਭਾਵੇਂ। ਪਰ ਜਿਹਨਾਂ ਨੂੰ ਕਹਿਣੀ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੀ ਕਹਿਤਾ। ਜਿਹੜਾ ਨੂੰ ਗੱਲ ਕਹਿਣੀ ਸੀ ਉਹ ਤਾਂ ਸਮਝ ਗਿਆ ਵੀ ਕੀ ਕਹਦੇ ਨੇ। ਉਹਨਾਂ ਨੂੰ ਸਮਝਾਉਣੀ ਦੀ ਲੋੜ ਨਹੀਂ ਸਮਝਾ ਕੇ ਕੀ ਲੈਣਾ। ਜਿਹੜਾ ਨੇ ਲਕੀਰ ਖਿੱਚੀ ਹੈ ਗੱਲ ਤਾਂ ਉਹਨਾਂ ਨੂੰ ਦੱਸਣੀ ਸੀ ਉਹ ਸਮਝ ਗਏ। ਬਿਸ਼ਹਾਰ ਦੂਸਰੋ ਉਹਨਾਂ ਨੂੰ ਇਸ਼ਾਰਾ ਕੀਤਾ ਵੀ ਇਹ ਗੱਲ ਦਿਲ ਕਰ ਲੋ ਬੰਦੇ ਵਿੱਚ ਹਰਤੇ ਬਿਨਾਂ ਕੋਈ ਹੋਰ ਹੈ ਨਹੀਂ ਸੰਸਾਰ ਹਰ ਨੂੰ ਢੀਜ ਦੱਸਣਾ ਅਪਰਾਧ ਹੈ ਕੋਈ ਨਹੀਂ ਇਸ ਅਪਰਾਧ ਦੀ ਸਜ਼ਾ ਵੀ ਵੜੂਗੀ ਅਸਲ ਚ ਗੱਲਾਂ ਇਹ ਰਹੂਗਾ ਐਡੀ ਗੱਲ ਕਹਿ ਕੇ ਗੱਲ ਖੋਲਤੀ ਗਾ ਨੂੰ ਹੁਣ ਵਿਚਾਰ ਕਰ ਲਿਓ ਜਿਹੜੇ ਹਰਦੀ ਟੱਲੀ ਵਜਾ ਕੇ ਪੂਜਾ ਕਰਦੇ ਉਸ ਦੇ ਅੱਗੇ ਬੁੱਝ ਖੜੇ ਹੋਣੇ ਜਾ ਕੇ ਹਰਦੀ ਦਾ ਪੂਜਾ ਕਰਦੇ ਹੋ ਤੁਸੀਂ ਓਏ ਉਹ ਤਾਂ ਪੱਥਰ ਦੀ ਪੂਜਾ ਕਰਦੇ ਹਾਂ ਹਰ ਉੱਥੇ ਕਿੱਥੇ ਜਿੱਤੇ ਹਰ ਹੈ ਉਹਦੀ ਕਰਨ ਦੇ ਜਿਉਂਦੇ ਆਦਮੀ ਤਾਂ ਹਰ ਹੈ ਉਹਦੀ ਕਰਨ ਤੇ ਉਦੋਂ ਤਾਂ ਸੱਚੀ ਪੱਥਰ ਦੀ ਪੂਜਾ ਕਰਨ ਲੱਗੇ ਓਦੇ ਰੇਲੇ ਚੇਤਨ ਹਰ ਨੂੰ ਉਹ ਨਹੀਂ ਦਿੰਦੇ ਜਿਵੇਂ ਹਰ ਵੀ ਕੋਈ ਤੇ ਵਰਤੇ ਨੇ ਤਾਂ ਹੀ ਵਰਤੇ ਨੇ ਉਹ ਵੀ ਤਾਂ ਹਾਰੇ ਕਰ ਰਹੇ ਕੌਣ ਖੋਹ ਕੌਣ ਕਰ ਕੌਣ ਉਹ ਹਰ ਕਾ ਨੂੰ ਕਰ ਰਹੇ ਹੈ ਉਹ ਹਰ ਬਿਲਕੁਲ ਬੰਦ ਕਰ ਰਹੇ ਹਨ ਹਰ ਦਾ ਬੰਦ ਆਪਣੇ ਕੰਮ ਹਰਦਾ ਹੀ ਬੰਦ ਕਰ ਰਹੇ ਹਨ ਹਾਂ ਬਿਲਕੁਲ ਕਰ ਰਹੇ ਹਰ ਤਰ੍ਹਾਂ ਦੀ ਹਰ ਹੀ ਤਾਂ ਫਿਰਦੇ ਇੱਥੇ ਜਨਮ ਨੂੰ ਹੈ ਹੈ ਦੇਖ ਰਿਹਾ ਹਲੂਈ ਹੈ ਪਰ ਸਰਬਵਿਆਪੀ ਦੇ ਅੱਡੇ 'ਚ ਬੰਦ ਹਰ ਇਹਦਾ ਤਾਂ ਫਰਕ ਹੈ ਬਹੁਤ ਫਰਕ ਹੈ ਤਾਂ ਫਰਕ ਹੈ ਨਾ ਇੱਕ ਬੇਹਦੂਦਾ ਬੰਦਾ ਬੇਵਸਾ ਇੱਕ ਆਜ਼ਾਦ ਆਜ਼ਾਦ ਨਹੀਂ ਹੈ ਆਜ਼ਾਦ ਹੋ ਜੂ ਕਿ ਮੈਂ ਜਦ ਦੂਜੇ ਨੂੰ ਆਜ਼ਾਦੀ ਨਹੀਂ ਦੇਣਾ ਚਾਹੁੰਦਾ ਉਹ ਖੁਦ ਖਲਾਉਂ ਜਿਹੜਾ ਭਗਤਾਂ ਆਪ ਆਜ਼ਾਦ ਹੈ ਸਭ ਨੂੰ ਆਜ਼ਾਦ ਕਰਦਾ ਹੈ ਕਿਉਂ ਦਾ ਵੀ ਸਭ ਆਜ਼ਾਦ ਹੋ ਜयो ਜਿਹੜਾ ਪੰਡਤ ਹੈ ਆਪ غلام ਹੈ ਸਾਰੇ ਆਪਣੇ ਗੁਲਾਮ ਰੱਖਦੇ ਚੌਂਦੇ ਬਿਸ਼ਰੂ ਰਾਜਾ ਸਾਰੇ ਨੂੰ ਆਪਣੇ ਗੁਲਾਮ ਰੱਖਦੇ ਚੌਂਦੇ ਸਾਰਿਆਂ ਨੂੰ ਗੁਲਾਮ ਰੱਖਣ ਦੀ ਜਿਹੜੀ ਪ੍ਰਵਿਰਤੀ ਹੈ ਅਸਲ ਚ ਆਪ ਵੀ ਗੁਲਾਮ अब्दुल्लाह श्री के खुदा है फिर इत्थे क्यों आए आसफुसा बराबर ही जेड़े कसम दी करते सी ओही इत्थे है जे कसम फिर गैर तंदर पाए वो ताना सबूतर दा मुकाबला बूज कर लगी सारे दे विचै हार ਤੇਰਾ ਰਾਜਾ ਸਾਰਿਆਂ ਨੂੰ ਕਹਦੇ ਆਪਣੇ ਵਾਸਤੇ ਲੜ ਰਿਹਾ ਜੁੜੇ ਸਾਡੇ ਅੰਦਰ ਸਾਰਿਆਂ ਨੂੰ ਬਚ ਕਰਦੀ ਇੱਛਾ ਕਿਉਂ ਹੈ ਹਰ ਦਾ ਸਾਰੇ ਜੇ ਬਚ ਕਿਉਂ ਕਰਨੇ ਚਾਹਦੇ ਇੱਥੇ ਤਾਂ ਰੱਬ ਨੂੰ ਵੀ ਬਚ ਵਿਚ ਕਰਦੀਆਂ ਕਹਾਣੀਆਂ ਨੇ ਹੂੰ ਫਰਕ ਰੱਬ ਉਸ ਕੀ ਨੇ ਇੱਥੇ ਤਾਂ ਫਰਕ ਇਹ ਬਰਤੀ ਉਲਟਾ ਆਪ ਦੀ ਵਸੂੜਾ ਚਾਹਦੇ ਕਰਨਾ ਚਾਹਦੇ ਹੈ ਕਰ ਨਹੀਂ ਜਵਨ ਦੇ ਦੂਵੇ ਕਰਨਾ ਚਾਹਦੇ ਹੈ ਸੈਰ ਬੇ ਲੋਭੇ ਇਹ ਹੰਕਾਰ ਦੀ ਐਕਸਟ੍ਰੀਮ ਹੱਦ ਹੰਕਾਰ ਇਹਨ ਕਿੱਥੇ ਤੱਕ ਚਲੇਗਾ ਹੰਕਾਰ ਇਹ ਰੱਬੂ ਅਜ ਕਰਪ ਦੀ ਗੱਲ ਹੋ ਬੇਲਾ ਸ਼ੇਰ ਕਰੇ ਤੂੰ ਦੇਖ ਕੋਲ ਉਹ ਬਿਜਾ ਰੱਬ ਨੂੰ ਵੀ ਬਚ ਕਰਨਾ ਚਾਹੁੰਦਾ ਪਾਣੀ ਦੇ ਚੱਲਣ ਦਾ ਮਤਲਬ ਨਹੀਂ ਰਿਹਾ ਮੇਰਾ ਇੱਛਾ ਹੀ ਨਹੀਂ ਹੈ ਤੇ ਮੈਂ ਜੇ ਬਚ ਆ ਗਿਆ ਤੇ ਰੱਬ ਸੱਚੀ ਹੋ ਤੈਨੂੰ ਮੈਂ ਤਾਂ ਕੀ ਕੀ ਕਰਾਉਂਗਾ ਉਹ ਕਹਿੰਦਾ ਸ਼ਿਵਜੀ ਦਾ ਕੜਾ ਹੱਥੇ ਜਾ ਗਿਆ ਲੈ ਪਹਿਲੇ ਤੈਨੂੰ ਪਸੂ ਕਰਨਾ ਸ਼ਿਵਜੀ ਨੂੰ ਕਹਿੰਦਾ ਪਸੂ ਪਸੂ ਜਿਹੜਾ ਜਿਹਨੂੰ ਇਸ਼ਟ ਮੰਨਦਾ ਉਹਨੂੰ ਪਸੂ ਕਰਨਾ ਚਾਹੁੰਦਾ ਪਸੂ ਪਸੂ ਪਸੂ ਪੂਰੇ ਦੀ ਬਰਦਾ ਕਿ ਉਹ ਤੇ ਬਰਦਾ ਕਿਹੜੇ ਧਰਮ ਚ ਇਹ ਜਾ ਕੁਝ ਹੋਵੇ ਧਰਮ ਤਾਂ ਇਹ ਬੜੇ ਨੇ ਧਰਮ ਉਹਨੂੰ ਪੜਨਾ ਚਾਹੀਦਾ ਉਹਦੀਆਂ ਕਮਜ਼ੋਰੀਆਂ ਦਾ ਪਤਾ ਲੱਗੇ ਡਾਕਟਰ ਜਦ ਕਿਸ ਬੀਮਰੀ ਨੂੰ ਤੁਸੀਂ ਲੈ ਕੇ ਜਾਓਗੇ ਜੇ ਪਹਿਲਾਂ ਕਿਸੇ ਹਸਪਤਾਲ ਰਹੇ ਹੋ ਪਹਿਲਾਂ ਉਹਦੇ ਸਾਰੇ ਕਾਗਜ਼ ਲਿਆਓ ਕੀ ਕੀ ਨੂੰ ਦਿੱਤਾ ਕੀ ਕੀ ਕੀਤਾ ਕੁਝ ਨਾ ਇਹਨੂੰ ਥੋੜੀ ਜਰੂਰ ਕਰ ਦੂਗਾ ਇਹ ਜਿਹੜੇ ਬਵਾਰ ਆਏ ਨੇ ਤੁਮਾਚੋਂ ਆਏ ਨੇ ਸਲਾਮ ਜੋ ਹੈ ਨਾ ਸਾਰਿਆਂ ਦੇ ਪਹਿਲਾਂ ਪੜਿਆ ਰੋਵੇ ਟ੍ਰੀਟਮੈਂਟ ਕੀ ਕਰਕੇ ਆਏ ਨੇ ਦੇਖੀ ਘਾਦੇ ਰਹੇ ਉਹ ਤੇ ਨੇ ਬਵਾਰ ਕਵੇਂ ਹੋਏ ਨੇ ਰਾਜੀ ਪੁੱਛਦਾ ਹੋਏ ਨੇ ਜੋ ਇਹਨਾਂ ਨੂੰ ਦਿੱਤਾ ਹੋਇਆ ਉੱਥੇ ਬਵਾਰ ਕੀਤੇ ਹੈ ਨਾ ਜਿਨ੍ਹਾਂ ਤੋਂ ਤੁਸੀਂ ਉਹ ਪੜ ਨਹੀਂ ਲੈਂਦੇ ਇਹਨਾਂ ਨੂੰ ਰਾਜੀ ਕਿਵੇਂ ਕਰ ਦੋਗੇ ਖਾਦੋਂਗਾ ਰਾਜੀ ਬੀਲ ਕਰ ਸਕਦੇ ਆ ਫਾਇਨੰਸ ਖਾਣੂ ਦੀ ਬਤਾ ਇਸ ਗੱਲ ਦਾ ਪਿਆਜ ਹੀ ਨਹੀਂ ਹੋਲੇ ਸਕਦੇ ਇਹਦਾ ਕੱਪੜੇ ਬਦਲੋ ਕਹਿੰਦੇ ਰਾਹੀ ਹੋ ਗਏ ਸਾਰੇ ਇਹਦਾ ਕੱਪੜੇ ਕੱਪੜੇ ਬਦਲ ਨੂੰ ਸਿੱਕੀ ਕਰਦੇ ਨੇ ਉਹਨਾਂ ਨੇ ਬਨ ਬਦਲੇ ਆਏ ਫੁੱਲਦੜ ਸ਼ਾਦਾ ਬਨ ਬਦਲੇ ਆਏ ਬਾਹਦਰ ਸ਼ਾਦਾ ਬਨ ਬਦਲੇ ਆਏ ਮੀਆ ਦਾ ਬਨ ਬਦਲੇ ਬੁੱਧੂ ਜਾਦਾ ਮਨ ਬਦਲੇ ਕਪੜੇ ਦਾ ਦੇਹੀ ਰੱਖ ਕਪੜੇ ਦਾ ਕੀ ਫਾਇਦਾ ਬਰ ਬਦਲੇ ਬਰ ਵਿਚਾਰ ਧਾਰਾ ਬਦਲੀ ਹੈ ਉਹ ਰੰਗ ਲਾਤਾ ਕੋਈ ਨਾ ਸੀਗਾ ਤੂੰ ਉਹ ਰੰਗ ਗੱਲ ਬਰ ਬਦਲਦੀ ਹੈ ਬਨ ਕਿਹਾ ਜਾ ਹੋਇਆ ਹੈ ਜੋ ਕੁਝ ਪਿੱਛੇ ਉਹ ਕੀਤਾ ਹੈ ਉਹ ਧਰਮ ਉਹ ਧਰਮ ਦੀ ਵੀ ਸਟੱਡੀ ਚਾਹੀਦੀ ਕਿ ਸਾਰੀ ਕਿ ਉਹਦੇ ਚ ਕਈ ਕਿਸਮ ਦੀਆਂ ਜਾਣੇ ਨੇ ਵਿਗੜੇ ਟਿਕੜੇ ਵੀ ਬਰੀ ਜਾਣੇ ਨੇ ਕਈ ਕਿਸਮ ਦੇ ਉਹਦੇ ਚਰਚਾ ਵੀ ਹੁੰਦੀ ਹੈ ਫਿਰ ਇਸ ਕਰਕੇ ਸਾਰੀ ਸਟੱਡੀ ਗੁਰਬਾਣੀ ਤੋਂ ਸਾਰੀ ਸਟੱਡੀ ਚਾਹੀਦੀ ਬਾਕੀ ਉਹ ਨਹੀਂ ਚਾਹੀਦੀ ਨਹੀਂ ਚਾਹੀਦੀ ਧਾਕਰ ਉਹ ਸਿਰਫ ਠੱਗੀ ਮਾਰ ਦੀ ਸਟੱਡੀ ਚਾਹੀਦੀ ਜੇ ਉਹ ਕਤਲ ਜੇ ਨਹੀਂ ਹੋਣੀ ਚਾਹੀਦੀ ਬਸ ਉਹਦੇ ਬਦ ਉਹਦੇ ਕਿਲੇਣੇ ਬਾਕੀ ਉਹ ਬਹੁਤ ਮੰਗਦਾ ਬਾਕੀ ਉਹ ਕਿਲੇਣੇ ਬਾਕੀ ਉਹਰ ਵਾਸੇ ਜੇਬ ਗਾਧਾ ਦੇ ਗੁਰ ਜੈਦੀ ਉਹ ਕਿਹਦੇ ਬਕਰੇ ਬੰਦ ਉਹਦੀ ਉਹਦੀ ਬਾਕੀ ਮੱਤਾਂ ਨੇ ਆਪਣੇ ਮਤਲਬ ਦੀ ਸਟੱਡੀ ਰੱਖੀ ਹੈ ਇਹਨੇ ਮੰਦਰਾ ਤੋਂ ਮੁਕਤ ਕਰ ਲਿਆ ਸਾਰਿਆਂ ਨੂੰ ਸੋਢੀ ਸਗਲ ਸ੍ਰਿਸ਼ਟ ਤਾਰੂ ਕੋ ਆ ਗਏ ਵਿਚੋ ਜਸਰ ਸ੍ਰਿਸ਼ਟ ਤਾਰੂ ਤਾਂ ਕਿੰਨੇ ਪਤਾਂਗੇ ਕਿੰਨੇ ਕਰਵਾਗੇ ਉਦੀ ਪੜਾਈ ਕਰਨੀ ਹੋਊ। ਇੱਕ ਦਮਾ ਪੜ੍ਹ ਕੇ ਨਹੀਂ ਸਰਦਾ ਜੀ ਨਹੀਂ ਅਗਰ ਕੋਰਸ ਵਿੱਚ ਨਹੀਂ ਵਰਦੇ ਆਪਾਂ। ਇਹ ਤਾਂ ਮੂਰਖਾਂ ਤੇ ਵਿਖੇ ਨਹੀਂ ਹਲੇ। ਉਹਨਾਂ ਮਤਾਂ 'ਚ ਨੁਕਸਕੀ ਹੈ ਕਿੱਥੇ ਕਿੱਥੇ ਕਿਉਂ ਉਹਨਾਂ ਤੇ ਨਹੀਂ ਮੁਕਤੀ ਹੋ ਸਕੀ। ਗੱਲ ਇਹ ਪੜਵਾੜੀ ਹੈ। ਉਹ ਦੱਸਦੇ ਨੇ ਫਰਲਾਨੀ ਵਾਰਤ ਜਾ ਕੁਛ ਆ ਉਹ ਪਤਾ ਹੀ ਹੈ ਮਤਾਂ ਦੇ ਹਰੰਥਾਂ 'ਚ ਕੀ ਹੈ। ਕਿਉਂ ਮੁਕਤੀ ਨਹੀਂ ਹੋ ਸਕੀ ਉਹਨਾਂ ਤੇ? ਕਾਰਡ ਕੀ ਸੀ ਗੱਲ ਇਹ ਪੜ੍ਹ ਰਿਹਾ ਰੋ ਬਤਾ ਇਹ ਤਾਂ ਵਿਦਵਾਨ ਪੜ੍ਹਦਾ ਜੀ ਵਿਦਵਾਨ ਵਾਂਗ ਬੁੱਧ ਆਇਆ ਕਹਿੰਦਾ ਬੁੱਧ ਆਇਆ ਕਹਿੰਦਾ ਉਹਦਾ ਪਤਾ ਹੀ ਨਹੀਂ ਬੁੱਧ ਕੀ ਕਹਿੰਦਾ ਉਹ ਤਾਂ ਗਲਤ ਗੱਲ ਠੀਕ ਹੈ ਮੇਲ ਖਦੀ ਹੈ ਕਿੱਥੇ ਆ ਕੇ ਮੇਲ ਨਹੀਂ ਖਦੀ ਕਣ ਪਰ ਇਹ ਕਰਨਾ ਸੀ ਕਿੱਥੇ ਲੱਗੋ ਰਸਤਾ ਠੀਕ ਹੈ ਕਿੱਥੋਂ ਦੇ ਸ਼ਹਿਰ ਹੋ ਗਿਆ ਉਹ ਥੋੜੂ ਰੁਕੈਤਾ ਵੀ ਭਾਈ ਇੱਥੋਂ ਐਰ ਹੋ ਜਾ ਜਿਹੜੇ ਉਧਰ ਬਾਹਰਾਂ ਠੀਕ ਹੈ ਕੋਈ ਨਹੀਂ ਭਾਈ ਚੱਲ ਪਰ ਅੰਦਰਲਾ ਜਿਹੜਾ ਉਧਰ ਅੰਦਰਲੀ ਜਿਹੜੀ ਸੀ ਗਤੀ ਜਿਹਦੇ ਵਾਸਤੇ ਬੈਠਾ ਸੀ ਗਤੀ ਜਿਹੜੀ ਸੀ ਤਾਂ ਰੁਕ ਗਈ ਉਹ ਅੰਦਰਲੇ ਨਹੀਂ ਪਾਇਆ ਜਿਹੜੇ ਜਿਹੜੇ ਤਰਨਾ ਸੀ ਗਾ ਧਰਮਬਲ ਧਰਮਬਲ ਉਹਦੇ ਬਲ ਤੇ ਤਰਨਾ ਸੀ ਤਾਂ ਉਹ ਤਾਂ ਮੰਨੇ ਵੱਢ ਸੀ ਦਿਆ ਤੇਰੇ ਅੰਦਰ ਹੈ ਨਹੀਂ ਦਿਆ ਬਰਦਾ ਸਿੱਧ ਵੀ ਤਾਂ ਸਹੀ ਹੈ ਬਾਜ਼ ਖਾਦਾਰੀ ਪਾਪ ਤੋਂ ਬਹੁਤ ਡਰਦਾ ਹੈ ਦਿਆ ਹੈ ਵੀ ਕਿ ਉਹ ਦਿਆ ਕਿੱਥੇ ਚਲੀ ਗਈ ਕਿੱਥੇ ਚਲੀ ਗਈ ਦਿਆ ਬੰਮਲ ਦੀ ਦਾਸ ਤੋਂ ਡਰਦਾ ਨਹੀਂ ਬਾਪ ਤੋਂ ਡਰਦਾ ਹੈ ਦਿਆ ਹੈ ਵੀ ਕਿਉਂ ਗਿਆ ਕਿਉਂ ਨਹੀਂ ਹੈ ਕੱਤੀ ਹੈ ਕੱਪਟੀਆਂ ਜਿੱਥੇ ਕੱਟ ਹੁੰਦਾ ਤੇ ਜਾਰੀ ਹੁੰਦੀ ਕੱਪਟ ਕੋ ਦਿਆ ਹੁੰਦੀ ਹੈ ਕੱਪਟੀਆਂ ਜਾ ਕੇ ਤੇ ਆਹਨ ਤੇ ਆ ਹੈ ਕਿ ਉਹਰੀ ਇੱਕ ਪਾੜਾ ਸੀ ਉੱਥੇ ਤੁਸੀਂ ਗੜ ਬੈਠੇ ਪਾੜਾ ਲੇ ਲੋ ਕ ਗੁਰਦਾਰੇ ਜੀ ਬੈਠੇ ਸੀ ਕਹਿੰਦਾ ਜੇ ਮਨ ਖਾਏਗਾ ਉਸ ਤੇ ਧਿਆਨ ਨਹੀਂ ਹੋ ਫਿਰ ਮੈਂ ਦੱਸਿਆ ਉਹਨੂੰ ਥੋੜੀ-ਥੋੜੀ ਹੌਲੀ-ਹੌਲੀ 50 ਮਿੰਟ ਚ ਘੇਰ ਕੇ ਫਸਾਲਿਆ ਫਿਰ ਤੁਸੀਂ ਪਾਂਡੇ ਆਇਆ ਨੇ ਕੱਪੜੇ ਲਾਹ ਲੜਿਓ ਲੋਕਾਂ ਦੇ ਗਰੀਬਾਂ ਦੇ ਵਿਦਿਆਏ ਉਹ ਟੀ ਕੰਮ ਆਰਦਾ ਮੇਰੇ ਕੋਈ ਕਿਰਾਇਆ ਨਹੀਂ ਗਾ ਨਾ ਕਿਰਾਇਆ ਵੇਚੋ ਲੈ ਜਾ ਕੇ ਪੇਚਦੀ ਇਹ ਦੇ ਦੇ ਆ ਕੋ ਦੇਣਾ ਉਹ ਗਰੀਬ ਦਾ ਕਰਾਇਆ ਕੇ ਲਿਆਇਆ ਤੂੰ ਉਹਨੂੰ ਦੇ ਕੇ ਭੇਜ ਕੋਸ਼ ਤੇਰੇ ਕੋ ਪੈਸੇ ਨਹੀਂ ਜੇ ਪਾਵੇ ਤਾ ਦੇ ਤੇਰਾ ਜਜ਼ਬਾਨ ਹੋ ਤਾ ਦੇ ਇਹ ਤਾਂ ਇਹੋਂ ਮਰੀ ਗੁਰੀ ਹੋਦੀ ਸੀ ਕਿ ਉਹ ਬੱਕੇ ਗਰੀਬ ਹੈ ਤੂੰ ਕਰਾਇ ਮੈਥੋ ਲੈ ਜਾ ਮੈਂ ਕੀ ਲੈਣਾ ਇੱਥੇ ਤੈਂ ਦੱਸਦਾ ਕੀ ਗੋਲੋ ਦਿੱਤਾ ਗੰਗਾ ਜਨੂਰ ਪਾਤ ਤੈਂ ਦੱਸ ਤੈਨ ਟੈਕਸ ਲੈ ਲਿਆ ਉਹ ਤੇਗਾ ਟੈਕਸ ਲੈ ਲਿਆ ਹੈ ਉਹ ਕਿਸਾਨ ਚਾਹੇ ਕਰਗੇ ਸਿਰ ਤੇ ਪੈਰਾਂ ਤੇ ਡੁੱਬਿਆ ਹੋਵੇ ਵੱਡਦਾ ਹੋਵੇ ਖੇਤ ਦੇ ਵਿੱਚ ਹਾੜੀ ਕੋਈ ਆਦਮੀ ਆ ਜਾਵੇ ਜਿੱਦੋਂ ਉਹਦੇ ਹੱਥੇ ਉਹ ਕਹਿੰਦਾ ਅਜੇ ਅਗਰ ਦਦਨ ਚਾਹੇ ਸਾਰੇ ਡੁੱਬੇ ਹੋਵੇ ਹੋਵੇ ਉਹ ਕਹਿੰਦਾ ਨਹੀਂ ਦੇਣਾ ਦਾ ਰੱਬ ਰੇ ਥੋ ਇਹਦੇ ਵਿੱਚੋਂ ਹੀ ਇਹ ਕਹਿੰਦਾ ਮੇਰਾ ਟੋਲਿਆ ਹੋਇਆ ਕਰ ਲੈ ਇਹ ਜੇ ਬਰਖਤ ਪਾ ਦੂੰਗਾ ਇਹ ਆ ਗਿਆ ਸਾਰਾ ਕੇ ਕੀ ਆ ਸਰਦ ਕੇ ਉਹਦੇ ਦੇ ਆਏ ਕੋ ਥੋੜੇ ਦੇ ਚੁੱਪ ਕਰਕੇ ਆ ਰੋ ਸ਼ਰਾਬ ਵੀ ਪੀਂਦੇ ਬੱਸ ਨਹੀਂ ਸਕਦੇ ਉਹਦੇ ਦੇ ਆਏ ਥੋੜੇ ਜੈ ਇਹ ਸਿਰਫ ਪਹੰਟ ਹੈ ਇਹ ਪਹੰਟ ਥੋੜੀ ਆਪਣੀ ਜਿਉਰੀ ਹੈ ਸਿੱਕਾ ਢਾਲ ਕੇ ਕੰਨ ਚ ਪਾ ਦੋ ਰਬ ਦੇ ਬੰਦੇ ਰਬ ਦੇ ਆਰ ਬੰਦੇ ਦੇ ਵਿਚਾਲੇ ਦੀਵਾਰ ਬਣਦੇ ਹੁੰਦੇ ਨੇ ਪਰ ਰਬ ਨੂੰ ਬੁਲਾਉਂਦੇ ਹੁੰਦੇ ਰਬ ਦੇ ਬੰਦੇ ਨੂੰ ਰਬ ਦੇ ਨਾਲ ਬੁਲਾਉਂਦੇ ਨੇ ਫ੍ਰੀ ਦਿਨ ਰਾਤ ਕਿਹਾ ਉਹਨਾਂ ਦਾ ਵੀ ਕੋਈ ਖਰਚ ਆ ਜਵੇ ਤਾਂ ਵੀ ਬਣਾਉਂਦੇ ਨੇ ਤੁਸੀਂ ਕਹਿੰਦੇ ਅਸੀਂ ਪੂਰੇ ਪੱਕੀ ਦੀਵਾਰ ਲਾਤੀ ਤੁਹਾਨੂੰ ਬਣਦੇ ਨਹੀਂ ਜਣ ਇਹ ਤੇ ਹੈ ਯੇ ਬਿਆਰ ਰੋਇਆ ਹੀ ਵਿਚਾਰੇ ਜਿਹੜੇ ਸੀ ਸਾਰੇ ਸੀਦਾ ਉਹਦੇ ਖਿਲਾਫ ਪਰ ਉਹਨਾਂ ਨੂੰ ਗੱਲ ਨਹੀਂ ਦੀ ਔਰ ਦੀ ਥੇ ਦਾ ਖਿਲਾਫ ਹੈ ਪਰ ਐਨ ਰਿਵਨੂ ਕਿਹੇਗੇ ਕਿਹੇਗੇ ਘੱਟੇਗੇ ਮੈਂ ਨਹੀਂ ਕੋਈ ਖਿਲਾਫ ਸਾਰੇ ਹੀ ਇਹ ਵੀ ਸੱਚ ਹੈ ਘੱਟੇ ਇਹਨੂੰ ਕਿਹਰੀਏ ਕਿਵੇਂ ਨਹੀਂ ਸੀ ਪਤਾ ਹੈ ਦਇਵਾਨ ਉਹ ਕਿਵੇਂ ਕਰੀਏ ਸਾਫ਼ ਕਰੀਏ ਕਰੀਏ ਕਾਜੀ ਕਗਾ ਕਾਲੋ ਮਨੇ ਮਨੇ ਇਹ ਬਿਨ ਹਰ ਦੂਸਰ ਨਾ ਹੋਆ ਨਾ ਹੋਉਨਾ ਜਦ ਤੱਕ ਉਹੀ ਸਮਾਏ ਅੱਜ ਤੱਕ ਹੋਇਆ ਦਰਗਾਹ ਨੂੰ ਹੋੜ ਹੈ ਹਰ ਤੇ ਬਿਨ ਹੋਰ ਕੋਈ ਸਾਰੇ ਹਰ ਸਮਝ ਜਿਹੜਾ ਹਰ ਹੈ ਉਹ ਪੂਜਨਯੋਗ ਹੈ ਛੇ ਆਪਣੇ ਅੰਦਰ ਹੈ ਕਿਹਦੇ ਸੇ कट कट में हर जीव बसा संत कहयो उदी सेवा हार्दिक करनी चाहिए शरीर दी नहीं करनी चाहिए शरीर दी आपा करनु अपने शरीर दी हर आपनी सेवा कर सकदा हम्म ए भी है, आसी कहिए अपनी शरीर दी आपनी सेवा कर सकदा ਹਾਉ ਮਦਦ ਕਿਤੇ ਮੰਗਦਾ ਤਮਨ ਦੇ ਸਕਦੇ ਹੋ ਪਰ ਇਹ ਹਮਾਕਤ ਹੈ ਅਲਮਗੱਲ ਆ ਕੇ ਬਹਿ ਜਾਣਾ ਹਮਾਕਤ ਪਰ ਵੈਸ਼ਰ ਨੇ ਸਭ ਕੁ ਪੈਦਾ ਕੀਤਾ ਹੈ ਕੀ ਕਰ ਸਕਦਾ ਉਹਦੇ ਵਾਸਤੇ ਬਾਹਰ ਹੋ ਗਿਆ ਤਾਂ ਤੂੰ ਬੈਠਾ ਹਮ ਹਮ ਹਮਾਕਤ ਹੈ ਹਮਾਕਤ ਹਮ ਬੇਲੈ ਦੁਆ ਲਫਜ਼ ਜਿਹਨੋਂ ਆਪਾ ਹੁਬੈ ਕਹਿੰਦੇ ਉਰਦੂ ਜਨ ਹਮਾਕਤ ਕਹਿੰਦੇ ਉਰਦੂ ਵਿਚਾਰ ਹਮਾਕਤ ਕਹਿੰਦੇ ਤਹਾਮਾ ਕਤ ਜੋਤੇ ਲੈਵਲ ਤੇ ਤੁਸੀਂ ਕੀ ਸਰਵਾ ਕਰ ਸਕਦੇ ਡਿਆ ਜਾਣੋ ਜੀ ਜੀ ਕੀ ਕੁਛ ਬਦਲ ਉਹ ਜਿਹੜੇ ਜੀ ਦੇ ਖਬੋਵੇ ਅੱਗੇ ਭੁੱਖਾ ਕੀ ਖਾਏ ਜਾਂ ਰਖਾ ਮਰ ਤੁਝੇ ਅਖਰ ਦਾ ਕਰ ਕਰ ਉਹ ਦੋ ਉਹਨੂੰ ਦੱਸ ਤਾ ਉਹਨੂੰ ਅੱਜ ਚਾਹੀਦੀ ਹੈ ਜੀ ਤੇ ਲੋੜ ਨਹੀਂ ਛੱਡ ਪਰਿਆ ਲੋਬਰੀ ਉਹ ਸਮਝਾਓ ਉਹਨੂੰ ਨਹੀਂ ਬਤਾਉਂਦੇ ਸਮਝਾ ਸਕਦਾ ਤੁਸੀਂ ਉਹਨੂੰ ਲਈ ਬਤਾ ਤਾਂ ਉਹਨੂੰ ਸਮਝਾਇਆ ਜਾ ਸਕਦਾ ਨਾ ਕੁਲੇ ਤਾ ਮੰਨ ਆਵੇ ਸਰਨਾ ਤਾਂ ਜਾਵੇ ਉਹਦੇ ਗੁਣਾ ਚ ਜੇ ਉਹਦੀ ਛੜਨ ਆਵੇ ਉਹ ਲੈ ਤਾਂ ਮਾਨ ਜੇ ਹੋਰ ਪਾਣੀ ਦੇ ਰੇੜੇ ਦੀ ਰੋਡ ਜਾਂਦਾ ਕੋਲੇ ਕਵੇ ਪਾਣੀ ਦੀ ਧਾਰ ਕੋਲ ਗੇਣਾ ਕੋਲ ਤਾਂ ਤੈਨੂੰ ਪਾਣੀ ਲੈ ਲੈ ਪਰ ਸਰਦੀ ਦਦਾ ਆਪਣਾ ਸਰਦੀ ਦਾ ਦਦਾ ਆਪਣੀ ਮੌਜੂਦ ਨਹੀਂ ਤਾਂ ਖਤਮ ਕਰਨਾ ਚਾਹੁੰਦਾ ਜੋ ਸਰੜਾਇ ਤੇਸ ਕੰਪਲ ਅ ਤਾਂ ਫਿਰ ਉਹ ਨਾਲ ਆਪਣੇ ਨਾਲੇ ਵਿਚੇ ਬਣਾ ਲੰਦਾ ਵਿਚੇ ਲੀਨ ਕਰ ਲੰਦਾ ਹ ਜਿਵੇਂ ਮੈਂ ਪਾਣੀ ਦੀ ਦੁੱਧ ਲੀਨ ਹੋ ਗਿਆ ਦੁੱਧ ਬਣ ਗਿਆ ਨੇ ਤੋ ਜੇ ਸ਼ਰਨ ਆਵੇ ਤਾਂ ਕੋਲੇ ਜੋ ਦੇਖੋ ਕਮ ਜਾਵੇ ਤਾਂ ਕੋਲੇ ਜਵੇ ਚੱਲਦਾ ਨਾ ਵਧਦਾ ਹੋ ਕੁ ਵਿੱਚ ਹਾਕਮਾਰ ਹੁਕਮ ਤੀਜਾ ਹੁਕਮ ਬਦਲ ਵਾਲਾ ਬੰਨਣ ਵਾਲਾ ਹਾਕਮਾਰ ਹੁਕਮ ਦੇ ਵਿੱਚ ਕੁੜ ਜਾਂਦਾ ਆਪਣਾ ਕੁजूद ਹੈ ਜੀ ਹਾਕਮ ਦੇ ਹੁਕਮ ਦੇ ਵਿੱਚ ਲੀਨ ਹੁਕਮ ਨਾਮ ਤਦ ਤੱਕ ਕਲਮ ਹੈ ਪੁਨਹ ਨਾਮ ਤਤ ਨਾਮ ਤਤ ਹੈ ਜੀ ਨਾਮ ਤਤ ਸਭ ਹੀ ਸਿਰ ਜਾਪਾ ਤਤ ਦਾ ਗਿਆਨ ਦਾ ਤਤ ਤਤ ਵਸਤੂ ਹੈ ਤਤ ਦੇ ਉੱਤੇ ਤੱਤੇ ਨੂੰ ਉਨਕਲ ਹੋਣਾ ចਹੀਦਾ ਇੱਥੇ ਹਾਂਜੀ ਤਤ ਹੈ ਜਿਹੜਾ ਨਾ ਉਹ ਤਤ ਵਸਤੂ ਹੈ ਵੀ ਜੋ ਦਾ ਗਿਆਨ ਵਸਤੂ ਦਾ ਗਿਆਨ ਜੁੜਿਆ ਹੈਗਾ ਇਹ ਪੁੱਧ ਹੈ ਦੁਬਾਰਾ ਇਹਨੂੰ ਆਪਣੀ ਖੁਰਾਕ ਬਣਾ ਲਓ ਇਹੀ ਖੁਰਾਕ ਹੈ ਬੰਦੀ ਫਟ ਘੜਾ ਸਾਜ ਮਰ ਗਿਆ ਜਿਆ ਖੁੱਲ ਗਿਆ ਪਹਿਤਾਂ ਲਿਆ ਜੀ ਜੀ ਖੁੱਲ ਗਈ ਪਹਿਤਾਂ ਲਿਆ ਉਹਨੇ ਥੋੜਾ ਖਰਾਗ ਦੀ ਗੱਲ ਆ ਗਈ ਨਾ ਖਰਾਗ ਵੀ ਹੋਈ ਬੜੀ ਨਾਮ ਤਾਂ ਤੇ ਖਰਾਗ ਵੜ ਗਈ ਨਾਮ ਤਾਂ ਚਲੀ ਹੋ ਗਿਆ ਬਸ ਦੋਏ ਚੀਚੇ ਦੀ ਲੋੜ ਹੈ ਸ਼ਰੀਰ ਨੂੰ ਕਿਸੇ ਨੂੰ ਕਦਰ ਮੇਲੇ ਤੇ ਨਾਮ ਤੱਤ ਕਲਮ ਹੈ ਪੁਨਰ ਜਨਮ ਦੁਆਰਾ ਇਹਦੀ ਖੁਰਾਕ ਸ਼ੁਰੂ ਕੀਤੀ ਹੈ ਖੁਰਾਕ ਸ਼ੁਰੂ ਕੀਤਾ ਕਲਪਨਾ ਦੇ ਵਿੱਚ ਨਾਭ ਦੀ ਖਾਂਦਾ ਆਇਆ ਖਾਂਦਾ ਪੈਦਾ ਹੁੰਦੀ ਉਹਤੇ ਨਾਭ ਦੀ ਇੱਛਾ ਰਹੇ ਖੁਰੋ ਜੀ ਰੁਪਜਾਤੀ ਦਾ ਭੋਜਨ जब ज्ञान भोजन हो जा कल्पना पे खत्म होगी असल में कल्प्लोर को पहले दबा के शुरू होगा ज्ञान भोजन पहला तो रुकनी पड़ेगी खत्मती होती है रुकती जाती है जब देखो आप जा गहडूवा बोले गैर वक्त एक बार रोक टायर दे टायर पे चलते रहलो हं चलती रहे गैर वक्त दिया गाड़ी ਰੋਕਿਆ ਤੇ ਬਰਾਂਗਿਆ ਨਹੀਂ ਪੜਾ ਬਸੇ ਬਾਪ ਜਿਹੜਾ ਹੈ ਨਾ ਇਹਨੂੰ ਰੋਕ ਲੈ ਗੇਰ ਮਕਸਰ ਦੂਆ ਪਾ ਲੈ ਬੈਗ ਪਰਿਆ ਹੈ ਦੂਆ ਬਾਲਣਾ ਹੈ ਬੈਗ ਗੇਰ ਪਿਆ ਹੈ ਰੂ ਬੈਗ ਗੇਰ ਪਿਆ ਤਾਂ ਨਹੀਂ ਗਾਹਮ ਜਾਂਦਾ ਤੈਨੂੰ ਬੈਗ ਨਹੀਂ ਪਿਆ ਪੁੱਠਾ ਗੇਰ ਪਿਆ ਪਕੜ ਲੈ ਦੂਆ ਪਾ ਲੈ ਆਵੇ ਸਪੀਡ ਫੜ ਗਿਆ ਉਹ ਪਹਿਲੇ ਜੋਰ ਦੂਜੇ ਜੋਰ ਬੋ ਅਵਸਥਾ ਬਦਲ ਲਈ ਜਗਿਆ ਉਹ ਤਾਂ ਫਿਰ ਬਦਲ ਹੀ ਹੋਈ ਹੈ ਪੂਗਮ ਨਿਊਟਰਲ ਹੋ ਗਏ ਜਿਊਟਰਲ ਹੋ ਕੇ ਪੂਗਾ ਇੱਕ ਵਾਰ ਜਿਊਟਰਲ ਮਰਨਾ ਨਹੀਂ ਹੈਗਾ ਅਸੀਂ ਮਾਰਦੇ ਹਾਂ ਸਰ ਖਤਮ ਹੋਏ ਕਰਕੇ ਤੂ ਅਗੇ ਪਰ ਨਿਊਟਰਲ ਕਰਦਾ ਕੋਈ ਨਹੀਂ ਉਹ ਖਾ ਡਿਊਟਰਲ ਕਰਕੇ ਬੋਸੇ ਪੈ ਜਾਂਦਾ ਹਾਂ ਪੜ੍ਹੇਦਾ ਨਹੀਂ ਪੜ੍ਹੇਦਾ ਨਹੀਂ ਪੜ੍ਹੇਦਾ ਹੀ ਨਹੀਂ ਮਾਰਦੀ ਮਤਲਬ ਕੀ ਚਾਹੁੰਦਾ ਹੈਂਦਾ ਨਹੀਂਦਾ ਨਿਊਟਰਲ ਕਰੇ ਸਿਪਰੇ ਪਾਉਂਦੇ ਨੇ ਘੇਰ ਉਹ ਆਪਣਾ ਬਗਵਾ ਲੈਂਦੇ ਨੇ ਪੈਂਦਾ ਹੀ ਨਹੀਂ ਹੈ ਜੋਗੀ ਨਿਊਟਰਲ ਨਹੀਂ ਕਰ ਰਿਹਾ ਡਿਊਟਰਲ ਦਾ ਗਿਆਨ ਗੱਲ ਕਵੱਦਾਂ ਬੰਨ੍ਹੇ ਇੱਕ ਵਾਰਾ ਬੰਨ੍ਹ ਡਕਾੜੋ ਕੋ ਨਾ ਰੋਕਣਾ ਕੋ ਹੁੰਦਾ ਬਸ ਇਹਦੇ ਬਰ ਡਿਊਟ ਆਫ ਦਾਈ ਦੀ ਜੋਗੀ ਦਾ ਬੰਨ ਡਿਊਟਲ ਹੋ ਰਿਹਾ ਵੈਗਰ ਵੈਗਰ ਵਾਲੇ ਦਾ ਰਿਹਾ ਰਿਹਾ ਕਿਸੇ ਦਾ ਨਹੀਂ ਹੋ ਰਿਹਾ ਡਿਊਟਲ ਡਿਊਟਲ ਹੋਏ ਤਾਂ ਮੇਰੇ ਘਰ ਨਹੀਂ ਪੈ ਇਹੋ ਜਿਹੀ ਗੱਲਾਂ ਵੀ ਵਧੀਆ ਨੇ ਯਾ ਆਪ ਲੋਕਾਂ ਨੂੰ ਗੱਡੀਆਂ-ਗੱਡੀਆਂ ਲੋਕ ਚਲਾਉਂਦੇ ਨੇ ਅਗਲਾ ਉਹ ਬਣਾ ਦਿੰਦੇ ਨੇ ਚਟਕਲਾਈ ਵੇਖਲਾ ਕੋਣ ਗੱਡੀ ਦਾ ਦਾ ਪਤਾ ਤੇ ਬਾਹਲਾ ਵਾਲੇ ਨਾਲ ਥੱਲੇ ਉੱਡਲ ਕੇ ਬੇਗਾਨੇ ਐ ਨਾ ਬਾਹਲਾ ਤਾਂ ਚੱਲੀ ਜਾਂਦੀ ਐ ਜਿਉਂ ਥੁੜਦੀ ਹੋ ਕਾਲ ਕਾਲ ਅਨਕ ਪਛਤਾਵੇਂ ਕਾਲ ਕਾਲ ਅਨਕ ਪਛਤਾਵੇਂ ਇਹ ਜਿਹੜੀ ਕਾਲ ਕਾਲ ਦੇ ਤੋਂ ਬਿਨਾਂ ਬਾਕੀ ਅਨੇ ਕਾਇ ਕਨ ਲੁਕਾਲ ਦੇ ਲੋਕ ਸਾਰੇ ਪਛਤਾ ਆਖਰ ਪਛਤਾਉਂਦੇ ਬਾਕੀ ਹਰ ਕਿਸੇ ਦੀ ਘਾਲ ਜਿਹੜੀ ਉਹ ਚ ਸਿਰਫ ਪਛਤਾਵੇ ਤਾਂ ਸਭ ਕੁਝ ਨਹੀਂ ਹੈ ਕਰੰਸੀ ਹੈ ਉਹ ਜਦੋਂ ਤੁਸੀਂ ਗਏ ਨਾ ਕਰੰਸੀ ਲੈ ਕੇ ਉਹਨਾਂ ਦੇ ਕੰਮ ਇਹ ਤਾਂ ਜਾਲੀ ਗਏ ਸਾਡੇ ਦਾ ਸਾਰੀ ਦੀ ਕਮਾਈ ਹੈ ਤੈਨੂੰ ਜਲਦੀ ਕਹਾਂ ਸੀ ਯਾਰੀ ਕਹਿੰਦੀ ਜਲਦੀ ਹੁਣ ਫਿਰ ਪੈਂਦਾ ਵਾ ਯੂ ਹੋਰ ਕਿਉਂ ਉਹਦਾ ਪੰਡਾ ਮੰਦੀ ਫਿਰਦਾ ਤੂੰ ਕਹਿੰਦਾ ਭਾਈ ਇਹ ਜਲਦੀ ਹੈ ਕਹਿੰਦੀ ਤੂੰ ਕਿੱਥੇ ਚੱਕ ਲਿਆ ਹੈ ਇੰਨੀ ਜਲਦੀ ਨਹੀਂ ਹੁਣ ਪੈ ਹੀ ਕਰ ਜਾਲੀ ਕਰੰਸੀ ਹੈ ਉਹ ਬਾਕੀ ਜਿਹੜੇ ਮੱਤਾਂ ਨੇ ਉਹਨਾਂ ਦੀ ਕਰੰਸੀ ਜੋ ਹੈ ਉਹਨਾਂ ਕੋ ਜੋ ਵੀ ਕੁਛ ਹੈ ਜਾਲੀ ਕਰੰਸੀ ਹੈ ਸੱਚ ਘਾਟ ਪਰਵਰਤ ਨਹੀਂ ਰਹਾ ਰਾਜ ਦੇ ਘਰ ਚ ਕੋਈ ਹਰ ਸਮਾਂ ਰਾਜਾ ਤਾਂ ਮੈਂ ਸੱਚ ਬੈਠਾ ਪਾਰਲੀਮੈਂਟ ਤਾਂ ਉੱਥੇ ਤਾਂ ਉਹਦੇ ਦੀ ਚੱਲਣੀ ਹੈ ਹਕੂਮਤਾਂ ਦਾ ਉਹ ਹੈ ਜਿਹੜੇ ਦੇਸ਼ਾਂ ਜਿਹੜੇ ਜਿਹੜੇ ਤੁਹਾਨੂੰ ਮੰਨਤਾ ਦਿੱਤੀ ਹੋਈ ਆ ਧਨ ਉਹ ਹੀ ਚਲੂਗਾ ਸੱਚੀ ਬਾਣੀ ਜਿਹੜੇ ਤੁਹਾਨੂੰ ਮੰਨਤਾ ਦਿੰਦੀ ਵੀ ਆ ਧਨ ਉਹ ਹੀ ਕਰੰਸੀ ਸਹੀ ਹੈ ਜਿਹੜਾ ਮੰਨਤਾ ਹੋ ਜਲੀ ਤੇ ਜਲੀ ਹੋ ਹੈ ਹਰ ਭਗਤੀ ਕਹਾਂ ਥਿਤੀ ਪਾਵੇ ਆ ਦੇਖ ਲੈ ਬੇਨਾਮ ਹਰਦੀਪ ਅਕਤਬਰ ਬੜ ਕੇ ਬਿਟਕੇ ਕੋਈ ਡਿਊਟਰ ਹੋ ਕੇ ਬਿਓ ਮੇ ਕੋਈ ਕਾਹ ਤੇ ਤਪਾ ਮੇ ਰੁਕ ਰੁਕ ਤੇ ਡਿਊਟਰ ਹੋ ਕੇ ਬਿਓ ਡਿਊਟਰ ਕਬੇ ਹੋਵੇ ਸੋ ਡਿਊਟਰ ਨਾ ਹੋਵੇ ਤਾਂ ਗੇਰ ਕਬੇ ਬਾ ਭਾਈ ਇੱਕ ਵਾਰ ਰੁਕੂਗਾ ਤਾਹਲੀ ਕੋ ਗੇਰ ਬਊਗਾ ਰੁਕਦਾ ਤਾਂ ਹੀ ਨਹੀਂ ਹੈ ਇਤੇ ਕਦ ਲਈ ਮਤ ਸਥਿਤ ਆਇਆ ਸਦਾ ਹੀ ਮ ਜਿਵੇਂ ਅਸਥਿਤੋਂ ਦਾ ਜਨਾ ਸਥਿਰ ਹੁੰਦਾ ਇਹ ਤੇ ਕਲਿਤਿ ਪਰ ਕਹਾਂ ਸਥਿਤ ਪਾਏ ਅਸਥਿਰ ਉਹ ਤਾਂ ਠੱਟਾ ਹੈ ਨਹੀਂ ਕੀ ਆਮ ਦਰ ਤੇ ਸਾਰੀ ਬਣ ਜੀ ਹੈ ਸੋਲਾ ਤੋਦਰ ਹਾਂ ਨਿਆ ਤੇਰਾ ਜਿਆ ਅਸਰ ਆਇਆ ਤੇਰਾ ਜਿਆ ਅਸਰ ਆਇਆ ਤੇਰਾ ਸੋਲਾ ਤੋਦਰ ਨਹੀਂ ਆਇਆ ਆਪਣੇ ਗੁਰਬਾਣੀ ਸਿਰ ਸਾਡੀ ਵਿੱਚ ਜਿਹੜਾ ਅਸਰ ਲਫਜ਼ ਹੈ ਉਹ ਨਹੀਂ ਹੈ ਸਥਿਰ ਉਹ ਹੈ ਜਿਹੜਾ ਜਿਹਨੂੰ ਅਸੀਂ ਥਿਰ ਕਹਿੰਦੇ ਉਹਨੂੰ ਸਥਿਰ ਕਰਦੇ ਨੇ ਜਿਹੜਾ ਸਥਿਰ ਹੀ ਹੈ ਡੋਲਦਾ ਹਿਲਦਾ ਉਥੇ ਆੜਾ ਲਾ ਕੇ ਨਾ ਇਹਦੇ ਅੱਗੇ ਡੱਕੇ ਬਲਾ ਕੇ ਅਸਥਰ ਬਣਾਉਂਦਾ ਅਸਲ ਦੇ ਵਿੱਚ ਦੁਰੀਆ ਦੇ ਵਿੱਚ ਕੁਝ ਵੀ ਥਿਰ ਨਹੀਂ ਲਫ਼ਜ਼ ਕਿਉਂ ਘੜਿਆ ਤੁਸੀਂ ਕਦੇ ਵਾਰਤ ਕਿੜੇ ਲਫ਼ਜ਼ ਜਸਤਰ ਹੈ ਹੀ ਨਹੀਂ ਕੁਝ ਸਥਿਰ ਕੀ ਦੇ ਵਾਸਤੇ ਹੈ ਬੇ ਸੰਸਾਰ ਕੇ ਮਾਨਾ ਉਹ ਸਿਰਲੀ ਹੈ ਉਹ ਅਸਰ ਅਸਰ ਬਾਕੀ ਤਾਂ ਸੁਧਾਰਤ ਕੁਝ ਹੈ ਹੀ ਨਹੀਂ ਕੋਈ ਥਿਰ ਨਹੀਂ ਹੈ ਥਿਰ ਆ ਸਥਿਰ ਥਿਰ ਦਾ ਸਥਿਰ ਆਪਣਾ ਥਿਰ ਕੋਈ ਗੱਲ ਹੋਗੀ ਰੋ ਸੇਸ ਭਾਸ਼ਾ ਦਾ ਥਿਰ ਆਪਣਾ ਥਿਰ ਕੋਈ ਥਿਰ ਨਹੀਂ ਵੀ ਥਿਰ ਹੈ ਹੀ ਨਹੀਂ 얘 ਸਥਿਰ ਲਫ਼ਜ਼ ਥਿਰ ਦੀ ਜਗ੍ਹਾ ਇਹਨਾਂ ਨੇ ਲਿਖਿਆ ਕਾਦੇ ਵਾਸਤੇ ਲਿਖਿਆ ਥਰ ਨਾਰੈਣ ਥਿਰ ਗੁਰੂ ਬਦੋ ਜੀਜਾ ਤਜ਼ਾ ਅਕਾਹ ਉਹ ਤਾਂ ਕੋਈ ਤਰ੍ਹਾਂ ਨਹੀਂ ਇਹਨਾਂ ਨੇ ਸਥਿਰ ਲਫ਼ਜ਼ ਕਿਦੇ ਵਾਸਤੇ ਲਿਖਦਾ ਪੂਰਨ ਸਸੇ ਲਵ ਦਾ ਲਿਆ ਕਬੀਰ ਕਹਿੰਦੇ ਬਾਯਾ ਡੋਲਣੀ ਇਹ ਕਹਿ ਕੇ ਉਹਨੇ ਕਹਿਤਾ ਵਿਦਵਾਨ ਬੂਰ ਖੋਦ ਤੁਸੀਂ ਜਿਹੜੀ ਚੀਜ਼ ਹੈ ਨਹੀਂ ਸਾਡੇ ਕੋਲ ਉਹਦਾ ਨਾਮ ਰੱਖਣ ਦਾ ਕੀ ਮਤਲਬ ਕਿਹੜੀ ਚੀਜ਼ ਦਾ ਨਾਮ ਸਥਰ ਕਹਿੰਦੇ ਜਿਹਨੂੰ ਅਸਥਰ ਕਹਿੰਦੇ ਉਹ ਸਰ ਹੈ ਦੀ ਜਿਹਨੂੰ ਇਹਦੇ ਸਥਰ ਬਨੇ ਉਹ ਸਰ ਹੈ ਦੀ ਜਿਹਨੂੰ ਇਹ ਮੂਬੇਲ ਬੱਲਿਆ ਨਾਲ ਇਹ ਮੂਬੇਲ ਉਹ ਹੈ ਦੀ ਕਿ ਪਰ ਪਾਗਲ ਹੋਏ ਹੋ ਕਿ ਬਦੂਤ ਯੂਨੀਵਰਸਿਟੀਆਂ ਦੇ ਸਾਰੇ ਕੀ ਕੇ ਦੇਖਦੀ ਹੈ ਇਹ ਜ਼ਮੀਨ ਨਾਲ ਜੁੜੇ ਹੋਏ ਨੇ ਸਾਰੇ ਹੂੰ ਜਮੀਨ ਹੋਵੇ ਜ਼ਮੀਨ ਫਰਕ ਹੈ ਕੀ ਫਰਕ ਹੈ ਇਹਨੇ ਫਰਕ ਜਿਵੇਂ ਫਰਕ ਦਾ ਵਰਕ ਦੂਏ ਤੇ ਬਿਲਕੁਲ 180 ਡਿਗਰੀ ਤੇ ਫਰਕ ਹੈ ਡਿਗਰੀ ਦਾ ਫਰਕ ਹੈ ਇੱਕ ਦਾ ਬਾਕੀ ਸਭ ਕੁਝ ਘੁਮਦੇ ਹੋਰੇ ਵਿੱਚ ਇਹਨਾਂ ਨੂੰ ਐਵਰੀ ਪਤਾ ਵੀ ਅਕਾਸ਼ ਖੜਾ ਹੈ ਐਵਰੀ ਪਤਾ ਇਹਨਾਂ ਨੂੰ ਐਵਰੀ ਪਤਾ ਹੈ ਕਿ ਹੁੰਦਾ ਕੀ ਹੈ ਇਹਦੀ ਤਾਂ ਬੁਰਬਾਣੀ ਜੀ ਬਹੁਤ ਘੱਟ ਬਿਆਖਿਆ ਕੀਤੀ ਹੈ ਦੀ ਬਹੁਤ ਘੱਟ ਬਿਆਖਿਆ ਕੀਤੀ ਪਰਮ ਤਤ ਔਰ ਇੱਕ ਤਤ ਇੱਕ ਤਤ ਕੀ ਤਤ ਤਤ ਆਈ ਤਤ ਪਰਮ ਤਤ ਆਪਕ ਪਰ ਉਹ ਤਾਂ ਚੇਤਰ ਚੇਤਰ ਦਾ ਸਰੀਰ ਹੈ ਇਹ ਕੋ ਸਰੀਰ ਹੈ ਸਭੈਸਤ ਹੈ ਉਹ ਲੋ ਇਕ ਤਾਂ ਤਾਂ ਬਰ ਇਕ ਤਾਂ ਤਾਂ ਗगन ਹੈ ਰਗਤ ਬਬਰ ਹੀ ਬਜਿਆ ਦੇਤੇ ਆਇਆ ਰਬ ਪ੍ਰਭਾ ਰੋਕਾ ਤਾਂ ਦੂਰ ਨਹੀਂ ਉੱਤੋ ਅਰੇ ਸਰਬਿਆਪੀ ਵਰ ਉਹ ਇੱਥੇ ਉਹ ਗਾਸ਼ ਨੂੰ ਮੰਨ ਕੇ ਜਰਾਂਗੇ ਹਾਂ ਮਾਇਆ ਮਾਇਆ ਗਾਸ਼ ਨੂੰ ਮੰਨ ਕੇ ਜਰਾਂਗੇ ਰਾਜੂ ਚੱਲਾਂਗੇ ਹੋਰ ਕੀ ਚੱਲ ਗਾਸ਼ ਮਾਇਆ ਬਾਇਆ ਜੇ ਅੱਡਮੀ ਹੋਈ ਜਾਂ ਵਿਚੇ ਆਕਾਸ਼ ਤੇ ਉਹ ਜਿਹੜਾ ਬੱਜੀ ਗਿਆ ਤੇ ਵਿਚੇ ਹੀ ਆਕਾਸ਼ ਚ ਹੀ ਅੱਡ ਹੋਈ ਹੈ ਗਾਸ਼ ਚ ਅੱਡ ਵਿਚੇ ਹੀ ਆ ਜੋ ਵਿਚੇ ਹੀ ਆ ਅੱਡ ਵੀ ਗਾਸ਼ ਵਿਚੇ ਹੀ ਆ ਕੋਲ ਮਹਾਰਸ ਅੰਮ੍ਰਿਤ ਤੇਹ ਪਿਆ ਕੋਲ ਮਹਾਰਸ ਅੰਮ੍ਰਿਤ ਤੇਹ ਪਿਆ ਉਹਨੇ ਬਸਾ ਦਾ ਵਰਤ ਕੋ ਖੋਲ ਕੇ ਪੀ ਲਿਆ ਮਾਨਕ ਹਰਗੁਰ ਜਾ ਕੋ ਦਿਆ ਦਾ ਕਹਿੰਦਾ ਉਹਨੇ ਪੀਤਾ ਜਿਹਨੂੰ ਹਰਗੁਰ ਦੇ ਹਰਗੁਰ ਕੈ ਦੇ ਦੇਖੋ ਹਰਗੁਰ ਅੰਦਰ ਹੈ ਹ ਵੀ ਹੋ ਸਕਦਾ ਸਤਗੁਰ ਬਾਹਰ ਵੀ ਹੋ ਸਕਦਾ ਹੈ ਦੇਤਾ ਹੈ ਹਰਗੁਰ ਅੰਦਰ ਬਾਹਰ ਨਹੀਂ ਹੁੰਦਾ ਹਰਗੁਰ ਨੇ ਰੇਗ ਆਪਣਾ ਅੰਦਰ ਬਾਲੜ ਦੇਦਾਰ ਇਹਨੂੰ ਸਤਗੁਰ ਕਹਿ ਸਕਦਾ ਉਹਦੇ ਖਾਤੇ ਸਤਪੁਰਖ ਜਿੱਦੇ ਜਾਣੇ ਸਤਗੁਰ ਤਸਕਰੋ ਆਪਣੇ ਵਾਸਤੇ ਉਹਦਾ ਹਰਗੁਰ ਹੈ فرمایا ਵਿੱਚ ਉਹ ਉਦਾਸੀ ਹੈ ਉਹ ਤੇ ਜਨਨ ਚਾਲੂ ਬਰਸ ਦੀ ਹਾਲੀ ਗੱਲ ਉਹ ਤੇ ਵੀ ਲਾਗੂ ਹੈ ਪਰ ਸਾਨੂੰ ਤਾਂ ਅੱਖਾਂ ਨਾਲ ਦਿਦਾ ਜਿਹੜਾ ਸਤਗੁਰੂ ਫਿਰ ਉਹ ਜੀਵਨ ਕਰਕੇ ਦਿਦਾ ਸਤਗੁਰੂ ਸੱਦੇ ਵਿੱਚ ਵੀ ਹੈ ਖਾਲੀ ਕੋਈ ਨਹੀਂ ਸਤਗੁਰ ਤੇ ਇਹ ਕਰਕੇ ਉਹਦਾ ਨਾਮ ਸਤਗੁਰਾ ਉਹਦੀ ਸਰੀਰ ਦਾ ਉਹ ਨਹੀਂ ਲਿਆ ਸਰੀਰ ਦਾ ਉਹ ਨਹੀਂ ਲਿਆ ਸਤਗੁਰ ਕਹਿ ਕੇ ਉਹਨੂੰ ਸਰੀਰ ਫਿਰ ਵੇਲੇ ਇਮੀਡੀਟ ਕਰਤਾ ਉਹ ਸ੍ਰੀ ਦਰੋਹੀ ਸ੍ਰੀ ਦੀ ਉਤੇਜ ਤਾਰਿਕ ਦੇ ਦੋ ਬਹੀ ਦੁਦਾ ਸਤੁਰ ਹੋਵੇ ਸੀ ਸਿਲਾਉ ਕੋ ਗਣ ਕਾਲ ਦੇ ਸਭ ਦੇਸ ਸਵਾਸ ਨਾ ਵੜਨ ਘਟਨ ਤਿਲਸਾਰ ਗਣ ਕਾਲੇ ਗਣ ਕੇ ਕਲੇ ਦੇ ਦਿਨ ਔਰ ਸਾਸ ਇਹ ਗੜਕੇ ਕਲੇ ਹੋਏ ਸਾਰੇ ਵੜ ਤੇ ਘਟਦੇ ਨਹੀਂ ਵਧਾਇਆ ਘਟਾਇਆ ਨਹੀਂ ਜਾ ਸਕਦਾ ਤੇ ਜਿੱਦ ਦੀ ਤੋਦਾ ਦੋ ਕੋਈ ਕਿਸੇ ਰੁਵਾਰ ਸਕਦਾ ਲੋਕ 50 ਸੰਗਰੇ ਬਚਾਵ ਨਹੀਂ ਦੰਦਾ ਮਾਰਦੇ ਅਸੀਂ ਹੋਰ ਵੀ ਵਧਾ ਸਕਦੇ ਹੂੰ ਉਹ ਉੱਦੇ ਹੁੰਦੇ ਕੋਈ ਕਾਰਨ ਬਣ ਜਾਂਦਾ ਉਹਨੂੰ ਜੀ ਆਕਸੀਜਨ ਲਾ ਕੇ ਹੋਰ ਸਾਹ ਦਵਾਤੇ ਉਹਦੇ ਉੱਦੇ ਹੁੰਦੇ ਉਹ ਉਹ ਬੜੇ ਦੇ ਨਾ ਹਾਂ ਵਾਹ ਤੁਸੀਂ ਉਹ ਗਿਣਤ ਹਾਲੇ ਸਾਰਨ ਨਾਲ ਆਕਸੀਨ ਵੀ ਮਰ ਗਣ ਕਰ ਲੈ ਸਾਸ ਬਸ ਤਾਂ ਫੇਰ ਜਾਣਾ ਜਾਂ ਤੂੰ ਭੁੱਖ ਜਾਣਾ ਮਰ ਬਾਕੀ ਜੀਵਨ ਲੋਰੇ ਪਰਮੋ ਨਾਨਕ ਤੇਉ ਫੇਰ ਵੀ ਕਹਿੰਦੇ ਜੀਵਨ ਲੋੜਦਾ ਨੇ ਉੱਚਾ ਘੜ ਕੇ ਕੱਲੇ ਨੇ ਫੇਰ ਜੀਵਨ ਲੋੜਦਾ ਕੀ ਮਤਲਬ ਹੈ ਭਰਮ ਜੀਵਨ ਲੋੜੇ ਭਰਮ ਭਰਮ ਕਰਕੇ ਨਾਨਕ ਨਾਕ ਤੇਊ ਗਵਾਰ ਉਹ ਕਹਿੰਦੇ ਬੋਰ ਬਸ ਉਹ ਗੱਲ ਰੱਖੋ ਕੋਸ਼ਿਸ਼ ਕਰਦੇ ਉਹ ਵੀ ਸੋਰੀ ਡਾਕਟਰ ਕਹੇਗਾ ਨਾ ਵੀ ਹੁਣ ਆਗੇ ਖੋੜੀ ਤੁਸੀਂ ਮਰਦੇ ਸੀ ਪਜਾ ਦਾਂਗੇ ਉਹ ਕਿਹੜਾ ਪਜਾ ਰੇ ਕਹਿੰਦਾ ਕੋਈ ਡਾਕਟਰ ਨਹੀਂ ਆਦਾ ਡਾਕਟਰ ਆ ਵੀ ਜਾਂਦਾ ਨੰਨਾ ਜੋ ਸਾਖਤ ਪ੍ਰਭ ਕੀਨ ਕਾਲ ਕਹਿੰਦੇ ਕਿੰਨੂੰ ਘਰਾਸਾ ਕਾਲ ਦਾ ਇਥੇ ਜਿਹੜੇ ਸਾਖਤ ਜਿਹੜੇ ਪ੍ਰਭ ਨੇ ਕੀਤੇ ਉਹ ਕਾਲ ਤੋਂ ਨਹੀਂ ਬਚ ਸਕਦੇ ਕਿੱਡੇ ਆਪਣੇ ਆਪ ਨੂੰ ਸੰਤ ਕਹ ਲਉਦੇ ਨੇ ਕਿੱਡੇ ਗੁਰੂ ਵਲੇ ਫਿਰਦੇ ਸਾਖਤ ਉਹ ਹੈ ਜਿਹੜਾ ਸੰਸਾਰ ਨੂੰ ਕੀ ਪਰਵੇ ਨਰਾਕਾਰ ਨੂੰ ਵੀ ਆਪਣੇ ਬੱਚ ਕਰ ਲਾਉਂਦੇ ਸੁਦਰਤ ਨੂੰ ਵੀ ਆਪਣੇ ਉਦਸਾਰ ਚ ਲਾਉਂਦਾ ਸਾਖਤ ਜਿਹੜਾ ਕਹਿੰਦਾ ਮੈਂ ਵਰ ਦੇ ਕੇ ਐਂ ਕਰ ਦੂੰ ਸਰਾਪ ਦੇ ਕੇ ਐਂ ਕਰ ਦੂੰ ਜਿਹਦੀਆਂ ਕਹਾਣੀਆਂ ਸਾਖੀ ਬਣਾਈਆਂ ਨੇ ਆਪਣੇ ਸਾਧਾਂ ਦੀਆਂ ਸਾਰੇ ਸਾਖਤ ਨੇ ਜੇ ਉਹ ਦੀਆਂ ਸ਼ਕਤੀਆਂ ਦੀ ਗੱਲ ਕਰਦੇ ਆਂ ਅਸੀਂ ਆਦਮੀ 'ਚ ਸ਼ਕਤੀ ਹੈ ਕੋਈ ਤਾਂ ਸਖਤ ਹੈ ਜਿਹੜਾ ਆਪਣੀ ਸ਼ਕਤੀ ਨੂੰ ਪੈਰਲਲ ਰੱਬ ਦੀ ਸ਼ਕਤੀ ਦੇ ਵਰਦਾ ਹੈ ਉਹ ਸਖਤ ਹੈ ਅਸਲ 'ਚ ਇੱਥੇ ਆ ਕੇ ਉਹ ਸਾਰੀਆਂ ਕਹਾਣੀਆਂ ਆਪਣੇ ਆਪ ਕਟੀਆਂ ਜਾਂਦੀਆਂ ਜਿਹੜੀਆਂ ਘਰਾਬਾਤਾਂ ਸੀ ਜੁਰਤੀਆਂ ਪਾ ਕੇ ਇਹ ਗੱਲ ਤਾਂ ਬਾਲੀਓ ਖਿਲਾਫ ਹੈ ਸਾਰੀ ਉਹ ਹੀ ਗੱਲ ਸੀ ਬੰਦਲੀ ਸਿੱਖੇ ਫਿਰ ਕਥਾ ਰਹੀ ਸੀ ਜੋ ਗੱਲਾਂ ਜਿਹੜੀਆਂ ਗੱਲਾਂ ਸਰਬਤੀਆਂ ਕੋਲ ਸੀ ਉਹ ਸਾਰੀਆਂ ਸਾਡੇ ਆਪਣੀ ਪਰ ਅਸੀਂ ਉਹ ਬੰਦਲੀ ਗッカ ਸਰ ਆੜਾ ਆਦਮੀ ਅਸੀਂ ਹੈ ਜੈਜਾ ਸੀਗੇ ਸਾਰਾ ਆਦਮੀ ਆਪਣੇ ਤੌਰ ਤੇ ਖੁਸ਼ ਹੁੰਦੇ ਨੇ ਵੀ ਸਾਡਾ ਤਾਂ ਵਧੀਆ ਉਹਨਾਂ ਦਾ ਘਟਿਆ ਜੇ ਕੋਈ ਉਹਨਾਂ ਦੇ ਕਰਾਵਾਤ ਸੀਗੀ ਵੀ ਵੱਡੀ ਤਾ असी ਉਹ ਤੋਂ ਵੱਡੀ ਕਿਵੇਂ ਦੱਸ ਲਈਏ ਉਹ ਬਰਸੀ ਕੋਈ ਝੂਠ ਝਾੜ ਹੋਰ ਬੋਲਾਂਗੇ ਝੂਠੇ ਕਹਾਣੀ ਬਣਾਵੋ ਇਹ कोई ਦੇ ਰਹੇ ਇਹੋ ਜੀ ਕਹਾਣੀ ਕੋਈ ਨਹੀਂ ਸੀਗੀ ਆਮ ਘਰਾਂ ਦੇ ਵਿੱਚ ਵੀ ਸਿਰ ਥੜੀ ਤੇ ਲੈ ਕੇ ਕੋਈ ਆਸ ਵੀ ਲੜ ਗਏ ਬੜਾ ਆਸ ਥੜੀ ਤੇ ਚੱਕਲੇ ਅਸੀਂ ਵੀ ਪੋਰੋਆਂ ਲਈਆਂ ਨਾ ਹਾਜੀ ਹੋ ਜੋੜਦੀ ਖੜੇ ਤਾਂ ਜਿੱਦ ਨੂੰ ਬੇਰਸਰ ਦਾ ਸਰ ਤੋਲਣ ਦਾਤਾ ਦਿਖਾਇਆ ਕ੍ਰਿਸ਼ਨ ਚ ਖੜਕ ਜਿੱਦ ਨੂੰ ਜਸਰ ਦੇ ਤਾਲੁਕ ਰੇਸ਼ ਨੂੰ ਕ੍ਰਿਸ਼ਨ ਨੂੰ ਹਾਂ ਲੈ ਲਿਆ ਸਰ ਛਲ ਕਰਕੇ ਦੇਉ ਕਹਿੰਦਾ ਸੀ ਵੀ ਜਿਹੜਾ ਸਵੇਰ ਦੇ ਮੌਕੇ ਮੇਰੇ ਕੋਲ ਬ੍ਰਾਹਮਣ ਆ ਗਿਆ ਜੋ ਬੂ ਬੂ ਬੇਦੂ ਕ੍ਰਿਸ਼ਨ ਨੇ ਮਾਮਨ ਨਾਲ ਗਿਆ ਲੈ ਉਹ ਉਹਨੇ ਮਿਖਾਣ ਵੀ ਲਿਆ ਕ੍ਰਿਸ਼ਨ 17 ਵਾਰ ਕ੍ਰਿਸ਼ਨ ਨੂੰ ਹਰਸ਼ਤ ਕੀਤਾ ਤੇ ਜੰਦ ਦੀਆਂ ਫੌਜਾਂ ਦੇ ਵਿੱਚ ਆਉਂਦਾ ਸੀ ਉਹ ਜਰਾਸੰਦ ਇਹਦਾ ਸੋਹਰਾ ਸੀਗਾ ਕਾਂਸ ਦਾ ਬਾਬੇ ਕਾਂਸ ਦਾ ਸੋਹਰਾ ਸੀ ਜਰਾਸੰਦ ਓ ਜਦੋਂ ਲੈ ਲਿਆਏ ਯਾਦੋਂ ਬੁਕਾਰ ਲਾ ਕੇ ਕ੍ਰਿਸ਼ਨ ਭਗਵਾਨ ਦੀ ਜੈ ਉੱਠ ਕੇ ਬੜਾ ਹਥਿਆਰ ਚਾਤੇ ਲੈਣ ਲੱਗ ਗਿਆ ਦਿਖਾਤਾ ਉਹ ਉਹ ਕੁੱਟੇ ਜਾਂ ਦੁੱਭਾਏ ਯਾਦੋ ਪੱਜ ਗਏ ਕ੍ਰਿਸ਼ਨ ਤੇ ਵਗੜ ਵਗੜਾ ਜੋ ਤੋਸ ਗੱਦੀ ਲਾਉਣੀ ਆਹੋ ਕਹਿੰਦੇ ਕੀ ਗੱਲ ਕਹਿੰਦੇ ਜੋ ਉਹਦਾ ਫੇਰ ਉੱਠ ਕੇ ਲੜਨ ਲੱਗ ਗਿਆ ਕਹਿੰਦੇ ਕਿ ਮੈਂ ਉਹਦਾ ਕਹਿੰਦੇ ਉਹਦਾ ਜਗਦਾ ਦੇਖੋ ਮੇਰੇ ਜੱਤੇ ਲੜੀ ਜਾਂਦਾ ਉਹਦਾ ਫੇਰ ਮੈਂ ਵੀ ਤੁਸੀਂ ਕੋਈ ਗੜਵੜ ਕੀਤੀ ਹੋ ਮੇਰੇ ਪਿੱਛੇ ਅਸੀਂ ਤਾਂ ਕਹਿੰਦੇ ਕੁਝ ਨਹੀਂ ਕਿਹਾ ਫੇਰ ਵੀ ਕਹਿੰਦੇ ਕਿ ਰਿਸ਼ਨ ਦੀ ਜਾਏ ਮੇਰੇ ਉਨਾਰੇ ਮਖੜੋ ਵੀ ਜਾਇ ਤਾਂ ਨਹੀਂ ਤਾਂ ਹੁੰਦੀ ਜੇ ਉਹਨੂੰ ਜਿੱਤਦਾ ਉਹ ਸਿਰ ਤਾਂ ਮੈਂ ਉਹਦੇ ਮੋਕੇ ਲਿਆ ਤੁਸੀਂ ਵੀ ਮੈਨੂੰ ਜਾਇ ਕਰਦੇ ਕੋਈ ਜੁੰਦਾ ਕਰਤਾ ਤੁਸੀਂ ਹੀ ਉਹਨੂੰ ਜਿੱਤਦਾ ਮੈਂ ਜਾ ਕੇ ਆਇਆ ਹੱਥ ਘੜ ਉਹਦੇ ਸਿਰ ਬੁੱਕਦਾ ਮੋਕੇ ਲਿਆ ਉਹਨੇ ਥਰਦੇ ਤਾਂ ਤੁਸੀਂ ਮੈਨੂੰ ਜਾਇ ਕਰਦੇ ਜਾਇ ਤਾਂ ਉਹਦੀ ਹੈ ਭਾਈ ਕਹਿੰਦਾ ਜੇ ਉਹ ਲਾ ਸਿਟਾਲੀ ਜਾਵੇ ਉਹ ਕਿ ਉਹ ਤਾਂ ਬਾਅਦ ਦਾ ਸਾਰਿਆਂ ਨੂੰ ਪਰ ਆਉਗਿਆ ਕਹਿੰਦਾ ਰੂਬੀ ਉਹ ਰਵਰ ਹਾਜੀ ਉਹਨੇ ਕਿਹਾ ਆਉਗਿਆ ਵੀ ਮਰਾ ਬਰਿਆਦਾ ਜਿਹੜੀ ਹੈ ਤੁਸੀਂ ਇਹਦੇ ਖਿਲਾਫ ਕਰਦੇ ਹੋ ਕਹਿੰਦਾ ਇਹਨਾਂ ਨੂੰ ਪੁੱਛੇ ਬਰਿਆਦਾ ਜਿਹਨਾਂ ਤੇ ਇਹ ਬਰਿਆਦਾ ਤੁਹਾਡੀ ਜਿਹੜੀ ਇਹ ਜਾਇ ਜਾਇ ਕਰਦੇ ਨੇ ਬਰਿਆਦਾ ਹੈ ਕਹਿੰਦਾ ਇਹ ਤਾਂ ਗਲਤ ਹੈ ਇਹ ਠੀਕ ਨਹੀਂ ਤੇ ਗੀ ਰਿ ਫਿਰ ਕਹਿੰਦੇ ਖੜ ਫਿਰ ਕਹਿੰਦੇ ਕ੍ਰਿਸ਼ਨ ਜਦ ਕ੍ਰਿਸ਼ਨ ਖਲਖ ਕ੍ਰਿਸ਼ਨ ਕਹਿਣ ਲੱਗੇ ਹਾਰੇ ਦੇ ਤੋਂ ਔੜੀ ਔੜੀ ਹਾਰੇ ਕ੍ਰਿਸ਼ਨ ਹਾਂ ਹਾਰੇ ਕ੍ਰਿਸ਼ਨ ਨਾ ਤੇ ਖਲਖ ਨਹੀਂ ਜਾਇਆ ਹਾਰੇ ਹਾਰੇ ਤੇ ਹਰੇ ਹਰੇ ਕਹਿਣ ਲੱਗੇ ਹਾਰੇ ਉਹਦੇ ਖਾਇਆ ਤਾਂ ਸੁਗਰਾਂ ਤੁਸੀਂ ਬਿਲਕੁਲ ਬੇਰੋਜ਼ਗਰ ਤੇ ਲੜਦਾ ਖੜਕ ਖੜਕ ਇਹਨਾਂ ਨੇ ਹਣਾ ਬਣਾ ਲਿਆ ਕੋਈ ਸਿੰਘਾ ਦਾ ਕੋਈ ਸਾਡਾ ਹੀ ਸੀ ਉਹ ਵੀ ਉਹਨੇ ਜਾਨੋ ਲੈ ਲਿਆ ਆਓ ਚੁੱਪੀ ਜਾ ਲਿਆ ਗਿਆ ਨਾ ਕਿ ਉਦੇ ਉਤਾਰਾ ਨੰਨਾ ਗ੍ਰੰਥਾ ਉਹ ਮੁਕਰਦੇ ਜਿਸ ਨੂੰ ਮੁਕਰਦੇ ਨੇ ਵੀ ਇਦਾਂ ਹੋ ਨਹੀਂ ਸਕਦਾ ਉਹ ਕਹਿੰਦੇ ਤੁਹਾਡੇ ਉੱਤੇ ਲਿਖਿਆ ਹੋਇਆ ਉਹ ਗਾਵੇ ਬਣਾ ਲੈਦੇ ਨੇ ਨਾ ਉਹਨਾਂ ਦੇ ਗ੍ਰੰਥਾ 'ਚ ਆਪਣੇ ਆਪਣੇ ਆਇਆ ਹੋਰ ਜਿਧਾ ਆਇਆ ਉਹਨਾਂ ਦਾ ਸਾਚੂ ਗਿਆ ਫਗੋਤ ਪ੍ਰਾਣ ਚ ਲਿਖਿਆ ਆ ਸਾਰਾ। ਉਹ ਸਿਵਜੀ ਜੂ ਜਿਹਨਾਂ ਨੂੰ ਬਾਣਾ ਤੋਂ ਪੁਲੀਸੀ ਫਿਰਦਾ। ਪਰ ਆਓ ਪਰ ਉਹ ਕਾਲ ਤੇ ਜੋ ਸਾਖਤ ਪ੍ਰਭ ਕਹਿੰਦਾ ਰਾਜੇ ਦਿਲ ਲਈ। ਦੱਲ ਲੋਟੀ ਜੁੜਦੀ ਨੇ ਲੜਾਈ ਤੇ ਸਾਰਾ ਆਜ਼ਮੀ ਇਹ ਲੜਾਈ ਦਾ ਰਾਜੇ ਦੀ ਹੁੰਦੀ ਹੈ ਤੇਰਾ ਕੀ ਮਤਲਬ ਲੜਾਈ ਕਹਿੰਦਾ ਮੇਰਾ ਭਗਤਾਂ ਮੈਂ ਨਹੀਂ ਬੰਦਾ ਕਹਿੰਦਾ ਚੱਕਾ ਫੇ ਚਲਾ ਜਾ ਚੰਗੀ ਚਾਹ ਤੇ ਤੂੰ ਕਹਿੰਦਾ ਨਹੀਂ ਮੈਂ ਛੱਡੇ تیر ਤੋਂ ਬਹੁਤ ਕਿਧਰੇ ਆਪ ਕਿਧਰੇ ਚ ਆ ਬਹੁਤ ਬੁਰੀ ਬੁਰੀ ਹੋਈ ਹੋਰ ਇਹ ਸਾਰਿਆਂ ਦੀ ਭਤਕਾਤੀ ਉਹਨੇ ਉੱਥੇ ਉਹਦਾ ਤਾਂ ਜੀਉ ਤਹ ਕੋ ਜਗ ਵਿੱਚ ਮੁਖ ਤੇ ਹਰ ਚਿੱਤ ਵਿੱਚ ਜੰਦੂ ਵਿਚਾਰਾ ਹੈ ਉਹ ਕਹਿੰਦੇ ਕੀ ਗੱਲਾਂ ਕਹਿੰਦਾ ਮੈਂ ਇਹਨੂੰ ਮਾਰਾਂ ਕਬੇ ਮੈਂ ਤੇਰੀ ਵਰਦਾ ਹੈ ਇਹਦੇ ਹੋਝ ਅੰਦਰ ਮੇਰਾ ਨਾਮ ਹੈ ਇਹ ਸਕਦਾ ਮੈਂ ਇੱਥੇ ਇਹ ਕਿਰਮ ਵਾਹ ਕਾਣੋ ਇਹਨਾਂ ਨੇ ਹੋਰ ਗੱਲ ਬਣਾਦੀ ਇਹਨਾਂ ਨੇ ਖੜਕ ਸਿੰਘ ਇਹਨਾਂ ਨੇ ਇਹ ਬਣਾਤਾ ਹਾਂ ਅਨਿਕ ਖੜਕਦੀ ਹੈ ਦਾ ਬਾਬਾ ਚੱਲਦਾ ਅਨ ਕਿ ਜੋ ਜਨਮੇ ਮਰੇ ਆਤਮ ਰਾਮ ਨਾ ਚੀਨ ਅਨ ਕਿ ਜੋ ਜਨਮੇ ਬਰੇ ਉਹਨਾਂ ਕੋ ਜੋ ਦੇ ਵਿੱਚ ਪੈਦਾ ਰਹਿੰਦੇ ਨੇ ਜੰਮਦੇ ਰਹਿੰਦੇ ਨੇ ਮਰਦੇ ਆਤਮ ਆਰਾਮ ਨਹੀਂ ਚੀਨ ਆਤਮ ਰਾਮ ਨੂੰ ਕੋ ਕਿਸੇ ਰੱਬ ਦੀ ਖੋਜ ਨਹੀਂ ਹੈ ਆਤਮਰਾਹ ਆਤਮ ਔਰ ਆਤਮ ਬਾਹਰਲਾ ਮਨ ਪਰ ਅੰਦਰਲਾ ਚੱਤਰ ਬੁਰ ਹਮ ਤਾਂ ਅਰਰ ਅਰਰ ਇਹ ਦਿਖੋ ਤੇ ਬਾਹਰ ਕੋਈ ਰਾਮ ਦੀ ਲੋੜ ਨਹੀਂ ਸੀ ਕੋ ਜਲਦੀ ਹਲ ਗਿਆਨ ਧਿਆਨ ਤਾਹੂ ਕੋ ਆਏ ਉਹ ਜਿਹੜਾ ਹਰ ਹੈ ਨਾ ਉਸ ਰਾਮ ਕਿਹਾ ਹੋਇਆ ਸਮੇਂ ਕਰ ਰਾਮ ਬੋਲੇ ਘਟ ਘਟ ਮੈਂ ਹਰ ਜੂ ਬਸ ਧਿਆਨ ਕਾਹੂ ਕੋ ਆਏ ਤਾਹੂ ਕੋਏ ਤਾਹੂ ਕੋਏ ਗਿਆਨ ਹੋਰ ਤੇ ਆਹੋ ਉਹdio ਸਭ ਚਾਉਦਾ ਉਸੇ ਨੂੰ ਪ੍ਰਾਪਤ ਹੁੰਦਾ ਕਿਰਪਾ ਜੇ ਆਪ ਦਿਵਾਏ ਜਿਹਦੇ ਤੇ ਕਿਰਪਾ ਕਰਕੇ ਆਪ ਦਿਵਾਵੇ ਬਾਹਲੇ ਵੱਲ ਦੀ ਗੱਲ ਪਰਮੇਸ਼ਰ ਦੇ ਵੀ ਕਿਰਪਾ ਹੋਵੇ ਸਤਿਧਿਵ ਵੀ ਕਿਰਪਾ ਹੋਵੇ ਤੇ ਇਹਦੀ ਵੀ ਹੋਵੇ ਅਸਲ ਦੇ ਵਿੱਚ ਜਿਹੜਾ ਜੀਵ ਹੈ ਜਦੋਂ ਇਹ ਚ ਪਰਵਰਤਨ ਹੁੰਦਾ ਹੈ ਆ ਪਰਵਰਤਨ ਉਹ ਉਹ ਜਿਆਦਾ ਹੈ ਹੁਕੂਮਤ ਪਾੜੋ ਪਰ ਫਿਰ ਇਹ ਤੇ ਕਿਰਪਾ ਹਥਿਆਰ ਰੱਖ ਦੋ ਉਹ ਉਹਨਾਂ ਦੇ ਕੇਸ ਮਾਫ ਕਰ ਦਾਂਗੇ ਉਹ ਕਰ ਦਾਂਗੇ ਉਹ ਕਰ ਦਾਂਗੇ ਉਹ ਕਿਰਪਾ ਬਾਅਦ ਜੇ ਬਾਅਦ ਜੇ ਗਣਤੀ ਗਣੀ ਨਾ ਕੋਉ ਛੁਟੇ ਗਣਤੀ ਗਣੀ ਨਾ ਕੋਉ ਛੁਟੇ ਗਣਤੀ ਨਾਲੇ ਕੋਉ ਛੁੜਦਾ ਪੁੰਨ ਪਾਪ ਦੇ ਵਿੱਚ ਗਣਤੀ ਹੈ ਜਿਹੜਾ ਪੁੰਨ ਪਾਪਨ ਦੀ ਗਣਤੀ ਹੈ ਕਿੰਨਾ ਪੁੰਨ ਤੇ ਕਿੰਨਾ ਪਾਪ ਗਣਤੀ ਹੈ ਬਾਕੀ ਜਿਹੜੇ ਬਾਲਾ ਫੇਰਦੇ ਨੇ ਉਹ ਵੀ ਗਣਤੀ ਹੈ ਸਾਹਿਬ ਦੇ ਪਾਠ ਕਰਦੇ ਨੇ ਉਹ ਵੀ ਗਣਤੀ ਹੈ ਸਮਝੋ ਗਣਤੀ ਸਾਰੀ ਕਰਮ ਕਾਂਡ ਹੁੰਦੀ ਕਿਦੇ ਖੰਡ ਪਾਠ ਕਰਾਇਆ ਇਹ ਗਲਤੀ ਹੈ ਕਿਤੇ ਗੁਰਦੁਆਰੇ ਮੈਂ ਬੁਗਣਾ ਤੇ ਗਲਤੀ ਹੈ ਇਹ ਸਭ ਕਿਰਤੀ ਹੈ ਕਿਰਤੀ ਮਾਇਆ ਦੇ ਅੰਦਰ ਮਾਇਆ ਜਿੱਥੇ ਤੱਕ ਹੈ ਜਿੱਥੇ ਮਾਇਆ ਖਤਮ ਹੋਏ ਤੇ ਕਿਰਤੀ ਖਤਮ ਹੋ ਜਾਵੇ ਮਾਇਆ ਖਤਮ ਹੋ ਹੀ ਜੂ ਕਿਰਤੀ ਕਦਵਾਦਗਾ ਆਇਈ ਤੇ ਤੁਲੇਵਾਇਆ ਮਤਾਂ ਅਮਰਵਾ ਨੀ ਬਾਇਆ ਦੋਇਰੇ ਯਾ ਫਿਰ ਆਪ ਦੋਗੇ ਤੋਕਾਤੇ ਹੋਏ ਅੱਧਾ ਬਾਇਆ ਦਾ ਬਾਇਆ ਕਰੀ ਹੋ ਗਿਆ ਅਧਨਰਾ ਦਾ ਹੋ ਗਿਆ ਅਬ ਇਸੇ ਦੂਜਾ ਦੂਵੇ ਪਾਏ ਬੁਚੀਏ ਗੜ ਪੈ ਇਸੇ ਚਮਤੀ ਆਸ ਦੂਜੀ ਬਾਬਰ ਨੂੰ ਨਾ ਤਰ ਤੋ ਬੁਚਾ ਆਇਆ ਛੋੜਾ ਛੋੜਾ ਕਾਚੀ ਗਾਗੜ ਭੂਟਾ ਇਹ ਜਿਹੜੀ ਦੀ ਕਾਚੀ ਹੈ ਇਹ ਤਾਂ ਪ੍ਰਕਾਯਤ ਦੀ ਜਿਹੜੇ ਹਿਰਦੇ ਵਿੱਚ ਕੱਚਾ ਗਿਆ ਹੁੰਦਾ ਵਹਿ ਲਿ ਡੋ ਬੜੀ ਸੱਤਾਂ ਕੇ ਅੰਦਰ ਇਹ ਉਹ ਵੀ ਕਾਚੀ ਗੋਗਰਾ ਅਸਲ ਜੋ ਸਰੀਓਗਾ ਕੱਪੜਾ ਫੋਟੋ ਨੂੰ ਰੋੜ ਜਦੋਂ ਤੇ ਗਿਆ ਜੋਗੀ ਵਪਰਾ ਖਲੇ ਫੁੱਟਣ ਕੋਈ ਫੁੱਟਦੀ ਉਹ ਦਾ ਫੁੱਟਣ ਉਹ ਜਿਹੜਾ ਘੜਾ ਬੰਦ ਹੈ ਉਹ ਹੀ ਭੰਦਿਆ ਸੱਚ ਆ ਉਹ ਘਰ ਉੱਥੇ ਘੱਟ ਗਿਆ ਘੱਟ ਬਾਹਰ ਦਾ ਥਰੀ ਫੁੱਟ ਗਿਆ ਕਿਵੇਂ ਸਮਝਾਉਣ ਵਾਸਤੇ ਉਹ ਤਾਂ ਉਹ ਰਹਾ ਤੈਨੂੰ ਪੈਰ ਦਾ ਦਿੰਦਾ ਉਹ ਤਾਂ ਐ ਕਹਦੇ ਵੀ ਜੱਟ ਮਰਦਾ ਤਬ ਜਾਣੀ ਜਦੋਂ ਤੇਰਾ ਦੁੱਢੀ ਵਰਦਾ ਦਾ ਦਿੰਦੇ ਨੇ ਨਰਮ ਕਰਦੇ ਨੇ ਹਾਂ ਉਹ ਤਾਂ ਉਹ ਫੇਫੜਾ ਉਹ ਪੰਜ ਸੱਤ ਦਿਨ ਦਸ ਦਿਨ ਜਿਹੜੇ ਤੇਰੇ ਉਹ ਘਰ ਦੇ ਪੁੱਲ ਪਰ ਜਾਂਦੇ ਨੇ ਫਿਰ ਆਉਂਦੇ ਜਾਂਦੇ ਜੇ ਕੋਈ ਆ ਬਈ ਫਿਰ ਘਰ ਦੇ ਕੋਈ ਕੀ ਪਤਾ ਲੱਗੇ ਰੋਟੀ ਖਾਦੀ ਅਗਲੀ ਖਾਦੀ ਕਿਵੇਂ ਉਹ ਤੇ ਬੈਸਲ ਉਹ ਆ ਵੀ 5 7 10 ਦਿਨ ਜਿਆਦਾ ਆਉਂਦਾ ਜਿਆਦਾ ਆਉਂਦੇ ਜਾਂਦੇ ਰਹਿੰਦੇ ਨੇ ਰੋਟੀ ਖਾ ਲਈ ਚਾਰ ਰੋੜ ਵਾਲੀ ਆਦਮੀ ਫੇਸ ਕਰ ਘਰ ਬੈਠਾ ਬੈਠਾ ਰੋਟੀ ਖੁੱਖੇ ਦੀ ਉਹ ਸਮਝਾਇਆ ਹੋਇਆ ਜਿਵੇਂ ਇਹਦੇ ਵਿੱਚ ਕੋਈ ओए कच्ची सवाल कोई करे भाई क्यों बंद देव है की है <laughs> कोई सवाल करे तो जवाब दइए सवाल और के हां जी जवाब है जी से कहता हूं वो याद करो ने को जवाब हो कुछ और दसुगा जीड़ा कट है कट कब पूरा होए ਜਿਹੜਾ ਗਿਆਨ ਆ ਘਟਦਾ ਨਹੀਂ ਹੈ। ਬੁੱਧੀ ਦੀ ਥੋੜੀ ਹੁੰਦੀ ਘਟ ਹੁੰਦੇ ਤੇ। ਸੱਚਾ ਗਿਆਨ। ਇੱਕ ਪਾਸੇ ਜਿਹੜਾ ਖੱਪਰ ਫੋਟ ਮਹੋੜਾ ਇੱਥੇ ਘਟ ਫੁੱਟੇ ਦੋ ਦੀ ਅਵਸਥਾ ਦੀ ਗੱਲ ਕੀਤੀ ਮਨ ਮੁਖ ਦੀ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਇੱਕ ਸਰੀਰ ਨਾਲ ਜੁੜਿਆ ਹੋਇਆ ਨਹੀਂ। ਹਾਂ। ਨਹੀਂ ਹੁੰਦਾ ਇਹ। ਤੇ ਘੱਟ ਦਾ ਮਲ ਸ਼ਾਰਟ ਸ਼ਾਰਟ ਥੋੜਾ ਨਹੀਂ ਹੁੰਦਾ ਹੈਗਾ ਘੱਟ ਫੁੱਟੇ ਬੁੱਧੀ ਹੁੰਦੀ ਹੈ ਉਹ ਹੀ ਸਟਾਰਟ ਅਗਲੇ ਚੜ੍ਹ ਵਿੱਚ ਹੋ ਜਾਂਦਾ ਜਿੱਦ ਡੱਕੇ ਨਰਮ ਹੈ ਬੁੱਧ ਉਹ ਹੈ ਨਹੀਂ ਉਹ ਕਟਾ ਵੰਦਾ ਸਰੀਰ ਚਰ ਜੈ ਜੀ ਬਿਵਸਦ ਕੋਈ ਸਰੀਰ ਨਹੀਂ ਘਟਾ ਵਦਾ ਕਦੇ ਰਹਿ ਗਿਆ ਵਦਾ ਵੀ ਨਹੀਂ ਘਟਾ ਬਣੀ ਲਾਹੇ ਟੋਟੀ ਜਾਂਦਾ ਹਾਂ ਜੀਵਤ ਜੇ ਜੀਵਤ ਜਪਿਆ ਸੋ ਜੀਵਤ ਉਹ ਹੈ ਜਿਹੜੇ ਜੀਵਤ ਨੂੰ ਜਪਿਆ ਹੁਣ ਜੀਵਤ ਇਕ ਜੀਵਤ ਹੈ ਜੀਵਤ ਹੋਰ ਤਾਂ万ਜੀਵਤ ਨਹੀਂ ਹੈ ਹੋਰ ਇਤਨੇ ਜਪਣਾ ਕਿ ਇੱਕ ਨੂਨ ਜਪਣਾ万ਜੀਵਤ ਨਹੀਂ ਹੈ ਬਲ ਜੀਵ ਹੈ ਸਤਗੁਰ ਜੀਵਤ ਹੈ ਜੀਵ ਪਰ ਪੈਦਾ ਹੁੰਦਾਰ ਹੈ ਮਰਦਾ ਵੀ ਉਹ ਜਿਹੜਾ ਚਿੱਤ ਉਹ ਤਾਂ ਜਾਣਦਾ ਉਹ ਤਜਾਤ ਜੋ ਹੁੰਦਾ ਉਹ ਰਾਸ਼ੀ ਸੌਦਾ ਦੀ ਇਹ ਜਾਗਦਾ ਸੌਦਾ ਹੈ ਜੱਬੜਾ ਬਰਦਾ ਜਾਗਣ ਦਾ ਸੌਦਾ ਲਈਏ ਉਹ ਜਾਗਦਾ ਸੌਦਾ ਦੀ ਇੱਦਾਂ ਲੈ ਵਾਹ ਲੈ ਜਾਂਦਾ ਤੇ ਬੰਦ ਹੁੰਦਾ ਜਦੋਂ ਉਜਾਣ ਲੈਂਦਾ ਉੱਧਰ ਲੈ ਜੀਵਤ ਨੂੰ ਉਜਾਣ ਲੈਂਦਾ ਫਿਰ ਇਹ ਵੀ ਜੀਵਤ ਹੋ ਜਾਂਦਾ ਫਿਰ ਇਹ ਸੌਦਾ ਦੀ ਹਮ ਜੀਵਤ ਪੇਖੇ ਨਹੀਂ ਜੀਵਤ ਪੇਖੇ ਜੀ ਮੁਖ ਜਾਗਾ ਹੈ ਦੀਦ ਰੋ ਸੋਵੇ ਆਪਣੇ ਕਬੂਤੂ ਧਿਆਲ ਦੂਏ ਪਾਸੇ ਹੁਣ ਗਮਨ ਰਸੋੜੇ ਅਪੜੇ ਕਬੂਤੂ ਕੋ ਚਲਾ ਜਾਵੇ ਸੋੜੇ ਰਹੀ ਕਾ ਜੀ ਦੂਏ ਪਾਸੇ ਚਲਿਆ ਜਾਂਦਾ ਜਿੱਦਾਂ ਜਦ ਦੋਵੇਂ ਪਾਸੇ ਤੇ ਜਾਂਦਾ ਹੈ ਉਹਨਾਂ ਚ ਰੁੱਤਈ ਹੋਇਆ ਉਹਦਾ ਚ ਜਾਗਦਾ ਸੌਦਾ ਹੈ ਹਾਂ ਸੌਣ ਲਾ ਕੇ ਚੱਲਦਾ ਰਹਿੰਦਾ ਰੋਬੜ ਗੁਰਮੁਖ ਜਾ ਕੇ ਨੀਂਦ ਫੇਰ ਇਹਨੇ ਜਾਗ ਜਪ ਲਿਆ ਜਪੇ ਦੇ ਬਾਲ ਤੇ ਹਲ ਟਿਕਦਾ ਹੈ ਧਿਆਵਲੋ ਜਿਹੜਾ ਹੈ ਨਾ ਧਿਆਵਲੋ ਧਿਆਵਲ ਜਪਣਾ ਲਈ ਹੁੰਦਾ ਜਪ ਲੈ ਤੇ ਬਾਲ ਧਿਆਨ ਟਿਕ ਜਾਂਦਾ ਜੋ ਚੀਜ਼ ਸੁਭਜ ਲਈ ਉਹਦਾ ਧਿਆਨ ਟਿਕਦਾ ਟਿਕ ਕੇ ਹੋਰ ਟਿਕਿਆ ਜਾਂਦਾ ਆਇਆ ਜੇ ਮਤਲਬ ਟਿਕਿਆ ਹੈ ਧਿਆਨ ਦਾ ਕਦੋਂ मेरा ਧਿਆਨ ਚ ਆ ਗੱਲ ਹੈ ਬਸ है ਚ ਆ ਪਰ ਵਕਤ ਤੇ ਆ ਲਿਖ ਬਸ ਨੂੰ ਤੇ ਉਹ ਲਾ ਜਪਣਾ ਧਿਆਨ ਟਿਕਾਉਣ ਵਾਸਤੇ ਹੈ ਧਿਆਉਣ कर ਜਪਣਾ ਸ਼ਬਦ ਨੂੰ ਭੁੱਲੇ ਰਾਣੀ ਤੋਂ ਆਇਆ ਉਹ ਲਾ ਲੈਣ ਦੇ ਸਿਮਰਣਾ ਸਿਮਰਣਾ ਸਿਮਰਣ ਕਰਾਇਆ ਫਿਰ ਸਿਮਰਣ ਦੇ ਬਾਅਦ ਜਪਣਾ ਲੱਗਿਆ ਜਪੜਾ ਹੈ ਲੋ ਫੋਜੜਾ ਹਮ ਆਪਾ ਚੀਰ ਲੋ ਜਪੜਾ ਜਾਂ ਲੋ ਸਭੀ ਲੋ ਫੋਜੜਾ ਚੀਰ ਲੋ ਜੀ ਜਪੜਾ ਲੱਗਿਆ ਚਾ ਲਿਆ ਖੋਜ ਲਿਆ ਫਿਰ ਧਿਆਨ ਆ ਗਿਆ ਧਿਆਨ ਤੇ ਗਿਆ विरोध ने जुड़ गया जे ध्यान है त जुड़या होया गाड़ कई भी हरि पजो एक गुण हो एक चित्त जे मंदा हर बौद्ध जुड़े रहना ही ध्यान बस जपना को है आया चिततर बते विचार होती एकता बलोड वास्ते जपे पहला तो पता ही एक नहीं एकता बलोड दी लोड है कि रही लोड ਉਦੋਂ ਸੇਵੜ ਬਈ ਸੀ ਸਵਰਿਆ ਕਿ ਆ ਗੱਲ ਦੀ ਲੋੜ ਹੈ ਫਿਰ ਉਹ ਗੱਲ ਲੋੜ ਵਾਲਾ ਨਾ ਹੈ ਜੇਬੇ ਲੋੜ ਪੂਰੀ ਹੋ ਗਈ ਜਪੜ ਨਾਲ ਲੋੜ ਪੂਰੀ ਹੋ ਸੀ ਅੱਛਾ ਪਿਆ ਧਿਆਨ ਦਾ ਵਾਸ ਫਿਰ ਬਾਤ ਧਿਆਨ ਹੈ ਧਿਆਨ ਤਰੋ ਤੇ ਕੋ ਵਰਵੇ ਜੇ ਕੋ ਅਬਿੱਤ ਅਮਿਤੋਜ ਅਬਿੱਤ ਤੇ ਆਬਿੱਤੋਜ ਅਬਿੱਤ ਜਬਾ ਤੇ ਸਭ ਤੇ ਤੇਜ ਦਾ ਉਤਾਲ ਹੀ ਬੰਦ ਤੇ ਉਹ ਤੋਂ ਜਿਸ ਬਾਰੇ ਯਾਰੀ ਚਾਹੀਏ ਹੋਏ ਪ੍ਰਗਟ ਪਏ ਨਾਨਕ ਨਾ ਛਪਿਆ ਉਹ ਜਿਹੜਾ ਭਗਤ ਹੁੰਦਾ ਜਿਹਦਾ ਧਿਆਨ ਹੋ ਜਾਂਦਾ ਪਹਿਲੀ ਪੁੱਕੀ ਅੱਤੀ ਹੈ ਜਿਹੜੀ ਪੁੱਕੀ ਉਤਲੀ ਸੋ ਜੀਵਤ ਜਿਹੇ ਜੀਵਤ ਜਪਿਆ ਆ ਜਿਹੜਾ ਜੀਵਤ ਜਪ ਲਿਆ ਜੀਵਤ ਹੋ ਗਿਆ ਉਹ ਫਿਰ ਜਿਹੜਾ ਜੀਵਤ ਹੋ ਜਾਂਦਾ ਪ੍ਰਗਟ ਕਰ ਦਿੰਦਾ ਸਭ ਕੁਝ ਬੀ ਜੀਵਤ ਕਦੇ ਹੋਈ ਦਾ ਬਾਰੇ ਬਹੁਤ ਸਾਰੇ ਖੇਡ ਪ੍ਰਗਟ ਕਰਦੇ ਕੋਕ ਵੀਰ ਪ੍ਰਗਟ ਹੋਈ ਖੇਡ ਕੀ ਖੇਡ ਲੈ ਲੈ ਕੁਝ ਉਹਦੇ ਨਾਲ ਪਰ ਇਹ ਖੇਡ ਪ੍ਰਗਟ ਉਹ ਤਾਂ ਬਹੁਤ ਕਰਦੀ ਖੇਡ ਪ੍ਰਗਟ ਹੋਈ ਦੋਏ ਪਾਇਦੇ ਝੂਠ ਵੀ ਪ੍ਰਗਟ ਹੋਊਗਾ ਦੋ ਦਿਸ਼ਾ ਕੋਈ ਚਿਤੋਂ ਪਰਗਟ ਹੋੜ ਕੇ ਆ ਦਰਮੰਦ ਦਾ ਮੰਡਲ ਦਾ ਫੜੂ ਬਾਈ ਮੈਂ ਬਨਾਰਸ ਕੇ ਠਾਕ ਬਨਾਰਸ ਕੇ ਸਾਥ ਠਾਕ ਪਰਗਟ ਹੋਏ ਤੇ ਕਿਹਾ ਬਾਈ ਸਾਜ ਆ ਭਗਤ ਪਰਗਟ ਨਹੀਂ ਛਪੇ ਸਲੋਕ ਜਿਤ ਚਿਤ ਉਹ ਚਰਨਾਰਬਿੰਦ ਪਰਗਟ ਪਏ ਆਪੇ ਗੋਬਿੰਦ ਮਾਲਿਕ ਸਾੰਤਿ ਲਾਭੇਗਾ ਵਿਕਾਸ ਦੇ ਹੋਵੇ ਉਹ ਬਤਾ ਤੁਹਾਨੂੰ ਪਤਾ ਲੱਗੇਗਾ ਰੋਮਪਾਤਾ ਖਾਲਸਾ ਰਹੀ ਹੁੰਦਾ ਹੈ ਨਾ ਵਿਕਾਸ ਹੋ ਵਿਕਸ ਜਾਣਾ ਇਹ ਸਾਬ ਵਿਕਸ ਜਾਣਾ ਦਾ ਮਤਲਬ ਵਿਕਸ ਜਾਣਾ ਸ਼ਾਂਤੀ ਦੇ ਵਿੱਚ ਬਿੱਤੀ ਹੁੰਦੀ ਬਿਕ ਸਾਤ ਹੈ ਸਦਾ ਬਤਾਂ ਤੇ ਵੀ ਜਰੂਰ ਹੋ ਬਿੱਧੀਆ ਬਤਾਂ ਕਾ ਜ ਵੀ ਬਿੱਧੀਆ ਬਿਕ ਸਾਤ ਵਿੱਚ ਵੀ ਬਿੱਧੀ ਗਈ ਨਹੀਂ ਹੋਦਾ ਬਤਾਲ ਉਹ ਉਹਦਾ ਕਬੂਲ ਜਿਹੜਾ ਸੀ ਐ ਹੋ ਗਿਆ ਸੀ ਟੇਡਾ ਖਬਰ ਜਦੋਂ ਪੌਦੇ ਨੂੰ ਪਾਣੀ ਨਹੀਂ ਲੰਗਿਆ ਉਹ ਫਿਰ ਦਾ ਹੋ ਗਿਆ ਫਿਰ ਝੁਕ ਗਿਆ ਥੱਲੇ ਜਦੋਂ ਪਾਣੀ ਗਿਆ ਸਿੱਧਾ ਹੋ ਕੇ ਖੜ ਗਿਆ ਸਿੱਧਾ ਹੋ ਕੇ ਖੜ ਗਿਆ ਉਹ ਦ ਕਵਲ ਵਿਕਸਾ ਤਾ ਸੀ ਬਸ ਜਿਤ ਜਿਤ ਵੋਂ ਉਚਾਰਨਾਰ ਵਿੱਚ ਵਿਕਸਾ ਜਦੋਂ ਚਿੱਤ ਜਿਹੜਾ ਹੈਗਾ ਵਿੱਚ ਚਿੱਤ ਬਿਆ ਚੜਨਾਰ ਵਿੱਚ ਦੂ ਦੈਰ ਉਲਟਾ ਹੈ ਬੋਲ ਸੀ ਸਦਾ ਹੋ ਕੇ ਖੜ ਗਿਆ ਕਿਹੜੇ ਵਿੱਚ ਆ ਗਿਆ ਚਿਤ ਚਿਤ ਉਹ ਚਰਨਾਰ ਬਿੰਦ ਉਹ ਦਕੋਰੇ ਸਾਥ ਟਾਰਗੇਟ ਪਏ ਆਪੇ ਗੋਬਿੰਦ ਨਾਮਕ ਸੰਤ ਮਤਾ ਚਿਤ ਬੋਰੀ ਹੈ ਚਿਤ ਬੋ ਬੋ ਸਾਰੇ ਸਾਡੇ ਇਹ ਉਪਦੇਸ਼ ਹੈ ਜੇ ਚਿਤ ਉਹ ਹੁੰਦਾ ਤਾਂ ਆਪਣੇ ਵਾਸਤੇ ਉੱਤੋਂ ਬੈਠੇ ਤੁਰਾਹ ਇਹਦਾ ਉਹ ਜੋ ਆਪ ਜਿਹੜਾ ਕੰਮ ਕਰ ਲਿਆ ਦੂਜੇ ਨੂੰ ਕਹੇ ਵੀ ਐ ਕਰੋ ਤੁਸੀਂ ਤਾਂ ਉਹ ਨੋਤੀ ਆਪਣੇ ਵਾਸਤੇ ਆ ਜੋ ਪਿੱਛੇ ਹੈ ਫਿਰ ਠੀਕ ਹੈ ਆਪਾਂ ਕਹਿੰਦੇ ਹਾਂ ਵੀ ਐ ਤੁਸੀਂ ਕਰੋ ਫਿਰ ਐ ਹੋ ਜੂਗਾ ਉਹ ਦਿਨ ਜਾਂ ਐ ਹੋ ਜਾਂਦਾ ਜੇ ਬੁਰਾ ਨੇ ਆਪ ਕੀਤਾ ਉਹਨੇ ਦੱਸਿਆ ਉਹ ਤਾਂ ਕਬੂਲ ਬਖਸਾ ਉਹਨਾਂ ਦਾ ਤਾਂ ਹੋਇਆ ਹੈ ਬੇਰਾ ਉਹ ਤਾਂ ਕਬੂਲ ਬਖਸ ਜਿਵੇਂ ਬਿਰੂ ਦੱਸਿਆ ਕੀ ਦੱਸਿਆ ਬਹੁਤ ਬੜਾ ਕਮੀ ਬਖਸਿਆ ਬਿਰੂ ਕਿਦਾਂ ਦੱਸਿਆ ਗੁਰੂ ਦੇ ਕਰ ਲਿਆ ਤੁਸੀਂ ਇਦਾਂ ਕਰ ਲੋ ਹੋ ਜਾਂਦਾ ਆਏ ਨਾ ਤੇ ਮੋਂ ਵੀ ਮਾਇਦਾ ਕੀਤਾ ਇੱਥੇ ਤੇ ਉਹ ਜੇ ਤੇ ਮੋਂ ਨਹੀਂ ਆਇਆ ਤਾਂ ਪੈਸੈਂਟ ਇਨਡੈਫੀਨਟ ਟੈਂਸ ਹੈ ਉਪਰ ਇਹਦਾ ਇਨਡੈਫੀਨਟ ਟੈਂਸ ਕੰਟੀਨਿਊਸ ਵੀ ਹੈ ਉਥੇ ਪਾਸ ਕਰ ਲਿਆ ਕਬੂ ਤਾਂ ਚਾਹੀਦਾ ਅਸvida ਦੇਖੋ ਤੁਸੀਂ ਜਿਹੜਾ ਕੱਪ ਲੈਣ ਕਰ ਚੁੱਕੇ ਹਾਂ ਉਹ ਤਾਂ ਉਹ ਸੈਂਸ ਵਿੱਚ ਹੋਵੇ ਗੱਲ ਬੁਤਾ ਹੈ ਜੀ ਚੇਤ ਮੋ ਚੇਤ ਵੇ ਹਾਂ ਪ੍ਰਗਟ ਪਏ ਆਪੇ ਗੋਬਿੰਦ ਨਾਲਕ ਸੰਤ ਮਤਾਵਾਂ ਪਰਗਟ ਪਏ ਆਪੇ ਗੋਬਿੰਦ ਗੋਬਿੰਦ ਤਾਂ ਆਪੇ ਪ੍ਰਗਟ ਹੋਊਗਾ ਸ਼ਬਦ ਆਪੇ ਪ੍ਰਗਟ ਹੋਜੂਗਾ ਇਸ ਸੰਤਮਤ ਸੰਤਨ ਦਾ ਸੰਤਨ ਨਮਤ ਤੇ ਇਹ ਦੂਜਾ ਸੰਤਾਂ ਦੀ ਉਪਤਾਰਨ ਆ ਮਤਾਂ ਤੋਂ ਬੋਵਾਂ ਚੱਲਦਾ ਦੋ ਕਿਹਿਆਂ ਸੰਤਾਂ ਦੀ ਹੱਤ ਉਹਨਾਂ ਦਾ ਆਪੇ ਉਹਦਾ ਤੁਰ ਲਾਪੇ ਪਤਾ ਲੱਗ ਗਈ ਉਹ ਠੀਕ ਨਹੀਂ ਹੋ ਉਹ ਆਪੇ ਛੁੱਟ ਜਾਣਗੀ ਆਪੇ ਉਹਨਾਂ ਪਰ ਦੂਰ ਹੋ ਜਾਊਗਾ ਹੂੰ ਚੜ੍ਹ ਚੜ੍ਹ ਚਰਨ ਕਮਲ ਗੁਰ ਦਾ ਚੜ੍ਹ ਚੜ੍ਹ ਚਰਨ ਕਮਲ ਗੁਰ ਲੰਦਾਂ ਗੁਰਦੇ ਚੜ੍ਹਦੇ ਕਮਲ ਨਾਲ ਜਿਹੜਾ ਲੱਗ ਗਿਆ ਚੜ੍ਹ ਕਮਲ ਗੁਰ ਇੱਥੇ ਆਇਆ ਲੱਗਦਾ ਵੀ ਗੁਰ ਚਰਨ ਕਮਲ ਨਾਲ ਲੱਗਿਆ ਕਿਹਦੇ ਨਾਲ ਲੱਗਿਆ ਫਿਰ ਹ ਚੜ੍ਹ ਕਮਲ ਗੁਰ ਦਾ ਬਸ ਸਤਗੁਰ ਦੇ ਚਰਨ ਖੁੱਲਰ ਨਾਲ ਜੁੜ ਗਿਆ ਜਿਹੜਾ ਸਤਗੁਰ ਦੇ ਗੁਰਾਂ ਨਾਲ ਗੋੜਾਂ ਨਾਲ ਜੁੜਿਆ ਉਹਦੇ ਜਿਹੜੇ ਗੁਣ ਸੀਗੇ ਉਹਦੇ ਗੁਣ ਸੀਗੇ ਇੱਕ ਦੇ ਜਿਹੜੇ ਗੁਣ ਨੇ ਉਹਦੇ ਗੁਣ ਨੇ ਗਰਵੈਰ ਹੈ ਨਿਰਭਉ ਹੈ ਉਹ ਸਾਰੇ ਗੁਣ ਨੇ ਉਹਨਾਂ ਨਾਲ ਜੁੜ ਗਿਆ ਗੁਣਾ ਜੁੜ ਦੋਦੇ ਚੜ੍ਹ ਦੋਦੇ ਤਾਂ ਤਾਂ ਸੁਭਾਗਾ ਜਿੱਦਣ ਲੱਗ ਗਿਆ ਸੀ ਉਹਦੇ ਚੜ੍ਹ ਨਾਲ ਉਹਦੇ ਗੁਣ ਨਾਲ ਜੁੜ ਗਿਆ ਸੀ ਉਹ ਹੀ ਸੁਭਾਗਾ ਸਜੋਗ ਸੀ ਉਸ ਦਿਨ ਜਿੱਦਣੇ ਤੈਨੂੰ ਤੁਰ ਪਿਆ ਸੀ ਦਰਬਾਰ ਹੋੜ ਵੱਲ ਤੁਰ ਪਿਆ ਦਰਬਾਰ ਜਿਹੜਾ ਸੀ ਗਾਂ ਬਾਨ ਅਚਤਦਾ ਉਹ ਹੀ ਵੱਡੇ ਭਾਗਲ ਦੀ ਗੱਲ ਸੀ ਸੁਭਾਗਾ ਸਜੋਗ ਸੀ ਹੂੰ ਚਾਰ ਕੁੰਟ ਦਹ ਦਿਸ਼ ਚਾਰ ਕੁੰਟ ਦਸੇ ਦਿਸ਼ਾ ਕੋਬ ਕੇ ਪਰਮ ਕੇ ਆ ਗਿਆ ਹੈ ਭਈ ਕਿਰਪਾ ਤਬ ਦਰਸ਼ਨ ਪਾਇਓ ਜਦੋਂ ਕਿਰਪਾ ਹੋਏਗੀ ਤਦ ਸ਼ਬਦ ਦਾ ਦਰਸ਼ਨ ਉਦੋਂ ਹੋਇਆ ਤੇ ਕਿਰਪਾ ਕੀ ਸ਼ਬਦਤਾ ਆਪਣੀ ਬਰਤੀ ਨਾਲ ਪ੍ਰਗਟ ਹੁੰਦਾ ਹੈ ਲੋਬ ਮਨੁਸਿ ਪ੍ਰਗਟ ਨਹੀਂ ਕਰ ਸਕਦੇ ਧਿਆਨ ਕਰ ਸਕਦੇ ਧਿਆਨਤਰ ਹੋਤੇ ਕੋਬਰ ਕੇ ਧਿਆਨ ਤਾਂ ਕੀਤਾ ਸਕਦੇ ਆ ਪਰ ਪ੍ਰਗਟ ਉਹਦੀ ਕਿਰਪਾ ਰੋਲੇ ਦਰਸ਼ਨ ਅਸੀਂ ਕਰਨਾ ਜਿਆਦਾ ਜਦੋਂ ਦਰਸ਼ਨ ਦੇਣ ਬਸ ਕਰਨੋ ਜਰੂਰਤ ਸੀ ਪਰ ਦੇਣੋ ਨੇ ਆਈ ਆਈ ਬੰਦੀ ਦਰਸ਼ਨ ਦੀ ਜੇ ਕੋਲ ਕੋ ਬਾਜੀ ਆਲੀ ਦਰਸ਼ਨ ਹਾਂ ਬਸ ਮੈਂ ਕਿਰਪਾ ਤੋਂ ਦਰਸ਼ਨ ਪਾਇਓ ਚਾਰ ਵਿਚਾਰ ਬਿਨਸੇ ਸਭ ਦੁਆ ਇਹੜੇ ਚਾਰ ਵਿਚਾਰ ਸੀ ਚਾਰ ਵਿਚਾਰ ਕੀ ਹੈ ਉਹ ਜਿਹੜੀ ਰਹਿਤ ਉਹ ਬਰਿਆਦਾ ਹੈ ਬਰਿਆਦਾ ਰਹਿਤ ਨਹੀਂ ਬਰਿਆਦਾ ਰਹਿਤ ਵੀ ਹੈ ਚਲੋ ਦੂਜੀ ਦੂਜੀ ਜਿਹੜੀ ਰਹਿਤ ਵੀ ਹੈ ਜਿਹੜੀ ਬਰ ਦੀ ਰਹਿਤ ਬਰਿਆਦਾ ਹੈ ਦੀ ਉਹ ਸਾਰੇ ਚਾਰ ਵਿਚਾਰ ਸਭ ਅਚਾਰਿੰਦ ਦੇ ਲਈ ਵਿਚਾਰਾਂ ਚਾਰ ਵਿਚਾਰ ਬਿਨਸੂ ਸੌ ਸੁੱਖ ਕੇ ਕਿਸ ਤਰੀਕੇ ਨਾਲ ਕੀ ਕਰ ਅਡਾ ਬੁੱਧਲਾ ਦੇ ਅਡਾ ਡੀ ਉਹਦੇ ਸਵੇਰੇ ਉੱਠ ਕੇ ਕੀ ਕਰਦੇ ਆਂ ਕਿ ਕਾਦਰਤ ਹੋਰੀ ਨਾਲ ਹੋਣੇ ਕਰਦੇ ਆਂ ਸਭ ਦੂਗਾ ਸੰਗ ਮਨ ਨਿਰਮਲ ਹੁਆ ਵੀ ਹੈ ਜਿਹੜੇ ਡਿਫਰੈਂਸ ਰਲਾ ਚਾਰਨ ਦੇ ਵਿੱਚੋਂ ਵਿਚਾਰ ਕਰਕੇ ਹੀ ਉਹਨਾਂ ਨੇ ਕਹਿੰਦੀਆਂ ਐ ਕਰ ਲੋ ਐਂ ਐ ਕਰ ਲੋ ਐਂ ਦੀ ਐ ਕਰ ਲੋ ਉਹ ਸਭ ਛੁੱਟ ਗਿਆ ਕਰਤ ਕਰਮ ਚੇ ਆ ਗਏ ਉਹ ਕਰਤ ਸਾਧ ਸੰਗ ਮਨ ਨਿਰਮਲ ਹੋਆ ਅਸਲ ਦੇ ਵਿੱਚ ਸਾਧ ਦੀ ਸੰਗਤ ਕਰਕੇ ਸਦੇ ਜੋਤੀ ਉਦ ਸੰਗਤ ਕਰਕੇ ਇਹ ਬਲਜਨ ਹੋਇਆ ਜਦ ਉਹ ਜਰਾ ਬਨ ਦਿੱਤਾ ਇੱਕ ਦਮ ਅਸੀਂ ਉਹੜਾ ਜਾਂ ਬੋਰਡ ਇਹ ਚਾਲੂ ਕਰਦਾ ਹੁੰਦਾ ਪਹਿਲਾਂ ਉਹਦੇ ਜੂੜੇ ਨਾਲ ਬੰਨ੍ਹ ਦਿੰਦੇ ਹਾਂ ਹਾਂਜੀ ਤੁਰੀ ਜਾਂਦਾ ਬਾਹਲੇ ਪਾਸੇ ਜਦੋਂ ਤੋਂ ਲੱਗ ਜਾਂਦਾ ਫਿਰ ਉਹ ਹੌਲੀ ਹੌਲੀ ਜੋੜ ਲੱਗ ਜਾਂਦੇ ਚੰਗੇ ਤਕੜੇ ਬੋਰਡ ਨਾਲ ਜੋੜਦੇ ਜਿਹੜੇ ਉਧਰ ਉਧਰ ਨਾ ਜਾਣ ਦਵੇ ਹਾਂ ਉਧਰ ਉਧਰ ਨਾ ਕਰਦੇ ਉਹ ਫਿਰ ਉਹ ਵੀ ਠੀਕ ਚੱਲਣ ਵਾਲਾ ਹੋਵੇ ਆਪਣੇ ਆਪ ਉਹ ਫਿਰ ਉਹ ਜੇ ਐਂ ਕਰਦਾ ਉਹਨੂੰ ਸੰਭ ਕੇ ਰੱਖਦੇ ਬੈਦਤ ਉਹ ਇਤਨੀ ਬਦ ਕਰਦਾ ਥੋੜਾ ਜਿਹਾ ਡੋਲਦਾ ਜੀ ਤਕੜੇ ਬਦਦ ਨਾਲ ਲਾਉਣਾ ਪੈਂਦਾ ਹਾਂ ਜੇ ਉਹਨਾਂ ਦਾ ਜੁੜ ਜਾਏ ਪਹਿਲਾਂ ਤਾਂ ਉਹਦੀ ਆਤ ਖਰਾਬ ਹੈ ਹਾਂ ਉਹ ਉਹ ਫੇਟ ਗਿਆ ਆਪਣੀ ਗਲਤੀ ਉਹਦੇ ਸੁਧਾਰੀ ਫਿਰ ਇਹਨੂੰ ਉਹਦੇ ਨਾਲ ਜੋੜਦਾ ਬੰਦੂ ਪਹਿਲਾਂ ਤਾਂ ਉਹ ਨਾ ਵੀ ਦੇਖਿਆ ਨਾ ਵੀ ਕਿੱਥੋਂ ਕਿੱਥੋਂ ਕਰਦਾ ਹੂੰ ਉਰਗੜਾ ਪਤਾ ਹੈ ਪੂਰੀ ਗੱਲ ਦਾ ਫੇਰ ਉਹ ਟਕਾ ਆਇਆ ਬਦੂਰਾ ਤਰ ਹੋ ਜਾਂਦਾ ਛੇਤੀ ਠੀਕ ਹੋ ਜਾਂਦਾ ਠੀਕ ਹੋ ਜਾਂਦਾ ਆਹੋ ਕੁਮੀ ਹੇ ਜਿੰਦ ਤੱਕ ਸਾਰੀ ਇੱਕ ਦ੍ਰਿਸ਼ਟੀ ਤਾ ਜਿਹੜੀ ਇੱਛਾ ਨਾਲ ਸਾਡੇ ਅੰਦਰ ਵੀ ਆਏ ਹੋ ਜਵੇ ਬਰ ਕੇ ਉਰੀ ਹੁੰਦਾ ਇੱਛਾ ਉਹਦੇ ਵਿੱਚ ਅਰਦਲੇ ਬਹਾਲ ਆਇਓ ਕਨੋਂ ਵੱਡਾ ਵਾਰਦਾ ਕਨੋਂ ਵੱਡਾ ਬਹਾਲ ਆਰਦਾ ਵੀ ਡੇਰੇ ਜੇ ਟਾਈਮ ਰੀ ਆਇਆ ਐਂd ਇਹ ਉਰੀ ਬਾਦ ਜਿਵੇਂ ਲਾਉਂਦਾ ਅੰਤਲਾ ਚਾਹੁੰਦਾ ਵੀ ਛੇਤੀ ਹੋਵੇ ਤੇ ਕੁਝ ਪ੍ਰਾਪਤ ਹੋ ਇਹ ਹੈ ਕਿੰਤ ਬਸਾਰੀ ਇੱਕ ਦ੍ਰਿਸ਼ਟੀ ਤੋ ਇੱਕ ਦ੍ਰਿਸ਼ਟੀ ਦੋਹਾਰੀ ਸੋਚ ਇੱਕ ਹੋਈ ਹੈ ਚਿਤ ਗਿਆ ਬੰਦ ਇੱਕ ਖੂ ਧਿਆਨ ਤਰ ਹੋਇਰਾ ਦਾ ਜੇ ਚਿਤ ਤਬਸਰੂ ਪਹਿਲਾ ਜਿਨਾ ਚਿਤ ਤਾਂ ਚਿੱਤੈ ਹੀ ਦਸਰ ਕਰਦੀ ਚਿੱਤਾ ਜਾਏ ਕਾਹਦੇ ਦੀ ਕਾਂ ਦੀ ਚਿੰਤਾ ਦੁੱਧ ਚਿੰਤਾ ਇਹ ਵੀ ਜਿੰਦਾ ਹੈ ਠੀਕ ਹੋਵੇ ਚੀ ਦੀ ਕੋਈ ਵੀ ਚਿੰਤਾ ਜਾਏ ਜੋ ਚਿੰਤਾ ਹੈ ਜਿਹੜੀ ਚੀਜ਼ ਦੀ ਹੈ ਪੋਜ਼ੀਟਿਵ ਹੈ 네ਗੇਟਿਵ ਹੈ ਕੁਝ ਵੀ ਹੈ ਉਹ ਧਿਆਨ ਨੂੰ ਡਿਸਟਰਬ ਕਰ ਦਿੰਦੀ ਹੈ ਗਈ ਧਿਆਨ ਕਿਥੋਂ ਟਿਕ ਗਿਆ ਚਿੰਤਾ ਵਿਚਾਰੀ ਇੱਕ ਦ੍ਰਿ ਸਟੇਤਾ ਨਾਨਕ ਗਿਆਨ ਅਨੁ ਜਿਹਨੇਤਰਾ ਹਲ ਕਿਵੇਂ ਹੋਇਆ ਪਰ ਗਨ ਅਜਰ ਫਾਲੋਅਪ ਆ ਐਲੋਕ ਉਹਦੇ ਬਾਅਦ ਇਹ ਚਿੰਤਾ ਵਿਛੜਦੀ ਹੈ ਵਿਛੜਦੀ ਚਿੰਤਾ ਸਾਰਾ ਘੌਰ ਲੈ ਕੇ ਪਾ ਕੇ ਅੱਖ ਦੇ ਵਿੱਚ ਬੁੱਧੀ ਚ ਬੁੱਧੀ ਦੇ ਜਿੰਦਾ ਖਾਲੀ ਬੁੱਧੀ ਦੇ ਗਿਆਨ ਅਧਿਅਤ ਕੇਤਿ